ਆਰ ਪੀ ਰੇਡੀਓ 1550 ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿਲ 11:10 ਹੋਏ ਨੇ 24 ਫਰਵਰੀ ਦਾ ਦਿਨ ਹੈ ਬੜਾ 2017 ਦਾ ਸ਼ੁੱਕਰਵਾਰ ਆ 13 ਨਾਨਕ ਸ਼ੇਸਮਤ 548 ਆਜੋ ਫਿਰ ਅੱਜ ਵੀ ਇੱਕ ਸਾਡੇ ਵਿੱਚ ਕਮ ਕਰਨਾ ਗੱਲਬਾਤ ਗੀਤ ਸੰਗੀਤ ਸ਼ੌਕ ਦੇ ਮਸਲੇ ਤੇ ਗੱਲਬਾਤ ਹੋਣੀ ਹੈ ਰਾਮਾ ਰੱਖਣਾ ਅੱਜ ਕੰਮ ਪਿਛਲੇ 4 ਦਿਨ ਥੋੜਾ ਜਿਹਾ ਕਿਹੜਾ ਵੱਧ ਚੜ ਗਿਆ ਸ਼ੁੱਕਰਵਾਰ ਦਾ ਦਿਨ ਹੈ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਵੀ ਗੱਲਾਂ ਹੋਣੀਆਂ ਤੇ ਪਹਿਲਾਂ ਵੀ ਸੂਤੇ ਰੱਖਣਾ ਕੰਮ ਇਸ ਸਟੋਰੀ ਵਿੱਚ ਇੱਕ ਇੰਟਰਵਿਊ ਹੋਣੀ ਹੈ ਦੂਸਰੇ ਦੋ ਇੰਟਰਵਿਊ ਜਿਹੜੀਆਂ ਸੁਣਨ ਵਾਲੀਆਂ ਇੱਕ 12:10 ਤੇ ਤੁਹਾਡੇ ਬੱਚਿਆਂ ਦਾ ਕੀਰਤਨ ਮੁਕਾਬਲਾ ਇੱਕ ਹੋ ਰਿਹਾ 12:20 ਤੇ ਨੀਮਾ ਡਰੋਲੀ ਪਈ ਇੱਕ ਵੱਡੀ ਦਾ ਬਹੁਤ ਵਧੀਆ ਪਲੇਅਰ ਤੇ ਰੀਡਰ ਸੋਨਾ ਸ਼ੀਟ ਕਾ ਜ ਮੁੰਡਾ ਇੱਥੇ ਸਾਡੇ ਪਹਿਲਾਂ ਪੌਂਦਾ ਰਿਹਾ ਉਹ WWE ਵਿੱਚ ਜਾ ਵੜਿਆ ਕਿੱਥੇ ਮੋਗਾ ਕਿੱਥੇ WWE ਕਹਾਣੀ ਸਿਰੇ ਆ ਜਾਂਦੀ ਆ ਪੰਜਾਬ ਦੇ ਜੰਮਿਆਂ ਦੀ ਉਈਓ ਸੂਤ ਆ ਜਾਂਦਾ ਜਿਵੇਂ ਸੁਹਾਗੇ ਤੋਂ ਸਟੂਡੀਓ 'ਚ ਮੈਂ ਵਰ ਗਿਆ ਆ ਕੇ ਇਉਂ ਹੀ ਗੱਲ ਕਿਤੇ ਪੈ ਜਾਂਦੀ ਆ ਉੱਪਰ ਨੂੰ ਪਤਾ ਹੈ ਉਹੀ ਥਾਂ 'ਇ ਰੱਖਦਾ ਬੰਦੇ ਦੇ ਕੀਤੇ ਕੱਖ ਨਹੀਂ ਹੁੰਦੀ 12 ਤੋਂ 1 ਇਹ ਗੱਲ ਹੋਏਗੀ ਤੇ ਨਾਲ ਗੀਤ ਸੰਗੀਤ ਹੋਵੇਗਾ ਨੀਨੇ ਢੋਲੀ ਦੇ ਨਾਲ ਢੋਲੀ ਭਾਈ ਨਾਲ ਗੱਲਬਾਤ ਕਰਨ ਤੋਂ ਬਾਅਦ ਪੁੱਛਾਂਗੇ ਵੀ ਕਿਵੇਂ ਡਿੱਗਦੇ ਆ ਕਿਵੇਂ ਬਿੰਗਾ ਟੇਡਾ ਕਿਵੇਂ ਖੜਕਕ ਕਰਦੇ ਕਿਵੇਂ ਖਾਸਾ ਕੋਸ਼ ਹੈ ਕਹਿੰਦੇ wwwh ਬਾਜੀਆਂ ਪਾਉਣੀਆਂ ਵੱਧ ਚਾਹੀਦੀਆਂ ਸੱਟ ਘੱਟ ਲੱਗਦੀ ਤੇ ਨਾਲ ਇੱਕ ਤੋਂ ਦੋ ਵੇ ਤੱਕ ਮੇਰਾ ਪਿੰਡ ਮੇਰੇ ਖੇਤ ਵਿੱਚ ਬਚਪਨ ਦੀਆਂ ਛੋਟੇ ਛੋਟੀਆਂ ਖੇੜਾਂ ਦੇ ਨਾਲ ਅੱਡ ਖਾਸ ਤੌਰ ਤੇ ਬੀਬੀਆਂ ਨੂੰ ਬੇਨਤੀ ਹੈ ਕਿ ਤੁਹਾਡੇ ਤੁਹਾਡੀਆਂ ਖੇਲਾਂ ਦੀ ਮੈਂ ਗੱਲ ਕਰਨੀ ਹੈ ਤੁਹਾਡੀ ਕਿਕਲੀ ਕਲੀਰ ਤੋਂ ਲੈ ਕੇ ਤੇ ਨਾਲ ਹੀ ਤੁਹਾਡੀਆਂ ਤੀਆਂ ਦੀ ਤੇ ਗੁੱਡੀ ਫੂਕੀ ਆ ਕਿਸੇ ਨੇ ਦੱਸਿਓ ਫੋਨ ਕਰਕੇ ਅੱਜ ਤੁਹਾਡੀ ਸ਼ਮੂਲੀਅਤ ਪਹਿਲਾਂ ਚਾਹੀਦੀ ਗਲੇਲ ਦੀ ਗੱਲ ਫੇਰ ਕਰਾਂਗੇ ਉਹ ਤੀਆਂ ਦੇ ਨਾਲ ਮੇਰੇ ਗਲੇਲ ਆ ਗਈ ਨਾ ਯਾਦ ਗਲੇ ਲੈ ਕੇ ਖਿੱਚ ਕੇ ਨਮੋੜੀਆਂ ਦੇ ਮਾਰਦੇ ਤੇ ਕੁੜੀਆਂ ਫਿਰ ਪਿੱਛੇ ਡਾਂਗ ਲੈ ਕੇ ਵੀ ਪੈਂਦੇ ਜਿਹੜੀਆਂ ਕੜੀਆਂ ਕੈੜੀਆਂ ਹੁੰਦੀਆਂ ਉਹ ਘਰੇ ਆ ਕੇ ਵੀ ਕੁੱਟ ਜਾਂਦੀਆਂ ਵੱਡੀਆਂ ਨੇ ਹੁੰਦੀਆਂ 18452471550 on air number krpradi.com ਤੇ ਸਿੱਧਾ ਫਸਾਰਨ ਸਿੱਧੇ ਪ੍ਰਸਾਰਣ ਤੋਂ ਬਾਅਦ ਵੀ ਜੇ ਗੱਲ ਨਾ ਬਣੇ ਨਾ ਸੁਣ ਹੋਵੇ ਤਾਂ ਖਬਰਨਾਮੇ ਤੇ ਪ੍ਰੋਗਰਾਮ ਹਲੇ ਆਪਾਂ ਪਾ ਰਹੇ ਹਾਂ ਫਿਰ ਲੋਕ ਸੱਤ ਤੇ ਵੀ ਪਿਆ ਕਰੇਗਾ ਤੇ ਖਬਰਨਾਮੇ ਤੇ ਵੀ ਨਾਲ ਨਾਲ ਪਿਆ ਕਰੇਗਾ ਬੰਦਾ ਆਪਣਾ ਮੁਰਿਆਣਾ ਫਰਵੀ ਦੇ ਮਾਰਚ ਦੇ ਪਹਿਲੇ ਹਫਤੇ ਇਹ ਉਸ ਤੋਂ ਬਾਅਦ ਨਿਮੀ ਡਾਲੋਜੀ ਦਾ ਨੰਬਰ 6044406462@info@radio.com info@radio.com ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਡਾ ਸੁਖ ਸੁਨੇਹਾ ਆਉਂਦਾ ਹੈ ਮਸ਼ਵਰੇ ਭੇਜਦੇ ਹੋ ਤੇ harjeet.g@radio.com ਤੇ ਤੁਸੀਂ ਈਮੇਲ ਕਰਦੇ ਹੋ ਕੱਕੇ ਵੇਤਿਆਂ ਦੀ ਬੋਲੀ ਮਾਰੂ ਥਲ ਲਿਖਦਾ ਨਹੀਂ ਉਹ ਸਾਗਰਾਂ ਸਮੁੰਦਰਾਂ ਦੀ ਛਲ ਲਿਖਦਾ ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨਹੀਂ ਉਹ ਖੇਤਾਂ ਵਿੱਚ ਹਰੇ-ਹਰੇ ਗੀਤ ਲਿਖਦਾ ਨੀ ਉਹ ਵਗਦਿਆਂ ਖਾਲਾਂ ਦਾ ਸੰਗੀਤ ਲਿਖਦਾ ਤੇ ਪਾਣੀਆਂ ਦੇ ਵਿੱਚ ਹਲਚਲ ਲਿਖਦਾ ਨੀ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨੀ ਉਹ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ ਇਤਿਹਾਸ ਨੇ ਕਟਾਇਆ ਬੰਦ ਬੰਦ ਲਿਖਦਾ ਨੀ ਉਹ ਮਸਲੇ ਮੁਸੀਬਤਾਂ ਦੇ ਹੱਲ ਲਿਖਦਾ ਨੀ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਸਤਰੰਗੀਆਂ ਜਵਾਨੀਆਂ ਦੇ ਚਾਹ ਲਿਖਦਾ ਨੀ ਉਹ ਬੁੱਢੇ ਹੋਏ ਨੈਣਾ ਚ ਦੁਆ ਲਿਖਦਾ ਹਰ ਬੱਚਿਆਂ ਦੇ ਬੁੱਲਾਂ ਉੱਤੇ ਝਲ ਲਿਖਦਾ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨਹੀਂ ਉਹ ਬੁੱਲੇ ਜਿਹੇ ਮਸਤਾਂ ਦੀ ਲੇਵ ਲਿਖਦਾ ਕਿਸੇ ਲੂਣਾ ਦੇ ਨੀ ਦਰਦੀ ਨੂੰ ਸ਼ਿਵ ਲਿਖਦਾ ਨਹੀਂ ਉਹ ਗੁੱਸੇ ਵਿੱਚ ਆ ਕੇ ਤੜ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨਹੀਂ ਉਹ ਰਾਂਝਾ ਦੇ ਮੱਥਿਆਂ 'ਚ ਹੀਰ ਲਿਖਦਾ ਨਹੀਂ ਉਹ ਯੋਧਿਆਂ ਦੇ ਖਾਤੇ ਸ਼ਮਸ਼ੀਰ ਸ਼ਮਸ਼ੀਰ ਲਿਖਦਾ ਸਾਡੇ ਵਰਗ ਇਹਨੂੰ ਸੱਪਣੀ ਦੀ ਖੱਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਹੈ ਹਰਮਨਜੀਤ ਹਾਂ ਚਾਹ ਲੋਲਾ ਜੀ ਮਨੁੱਖ ਦਾ ਕੁਦਰਤ ਦੇ ਨਾਲ ਬਹੁਤ ਅਸੀਮ ਸਬੰਧ ਹੈ ਕੁਦਰਤ ਦੇ ਵਿੱਚੋਂ ਅਸੀਂ ਪੈਦਾ ਹੋਏ ਮੂਰੂਪ ਚ ਸਾਡਾ ਸਾਰਿਆਂ ਦਾ ਸਬੰਧ ਇਸ ਧਰਤ ਦੇ ਨਾਲ ਹੀ ਹੈ ਜੋ ਭਰਪੂਰ ਸਾਡਾ ਵਣਾਂ ਦੇ ਨਾਲ ਜੰਗਲਾਂ ਬੇਲਿਆਂ ਦੇ ਨਾਲ ਬਹੁਤ ਗੂੜਾ ਸਬੰਧ ਹੈ ਤਾਂ ਹੀ ਜੀ ਕਰਦਾ ਜਦ ਬੰਦਾ ਟੁੱਟ ਜਾਂਦਾ ਉਹ ਕਹਿੰਦਾ ਮਾੜੀ ਜੀ ਸੈਰ ਨੂੰ ਚੱਲੀਏ ਯਾਰ ਅੰਦਰ ਮਾੜਾ ਜੀ ਸੜਕ ਤੋਂ ਹਟ ਕੇ ਚੱਲੀਏ ਕਿਤੇ ਪਾਰਕ ਚੱਲੀਏ ਕਿਤੇ ਜੰਗਲ ਚੱਲੀਏ ਕਿਤੇ ਪਗਡੰਡੀ ਚੱਲੀਏ ਤੇ ਆਰਾਮ ਮਿਲੇ ਇਸੇ ਕਿਤੇ ਜੰਗਲ ਦੇ ਵਿੱਚ ਸਾਮਣੇ ਛੋਟੀ ਜੀ ਕਿਤੇ ਕੋਈ ਝੀਲ ਹੋਵੇ ਤੇ ਇੱਥੇ ਤੰਬੂ ਗੱਡਦੀਏ ਤੇ ਮੁੜੀਏ ਨਾ ਬਣਾ ਦੇ ਸਿੱਲੇ ਤੇ ਘੋਰ ਹਨੇਰਿਆਂ ਦੇ ਵਿੱਚ ਸਾਡੀਆਂ ਪੈੜਾਂ ਕਿਤੇ ਛਿਪ ਨਾ ਕਿਉਂਕਿ ਬਣਾ ਦੇ ਵਿੱਚ ਹੀ ਸਾਡੀ ਕਹਾਣੀ ਬਣੀ ਕੁਦਰਤ ਦੇ ਵਿੱਚ ਪਸਾਰੇ ਦਾ ਸਿਧਾਂਤ ਹੈ ਜਿਹੜਾ ਉਹ ਬਹੁਤ ਵੱਡਾ ਆਪਣੇ ਪੈਰਾਂ ਤੇ ਖੜੇ ਹੋ ਕੇ ਸਾਡੀ ਸਿੱਧੀ ਪਿੱਛ ਸਾਡੀ ਤੁਰ ਤੁਰਨ ਦੀ ਕਾਬਲੀਅਤ तोर ਤੋਰ पिछे ਪਿੱਛੇ ਉਹ ਬਨਰ ਬਨਰ ਮਨਾਵਾਂ ਦੀਆਂ ਪਿੰਜਣੀਆਂ ਫਰਤੀਆਂ ਛਾਲਾਂ ਜਿਨ੍ਹਾਂ ਦੇ ਵਿੱਚੋਂ ਅਸੀਂ ਉਪਜ ਉਹੋ ਹਲੇ ਵੀ ਕੰਦਰਾ ਪਹਾੜਾਂ ਦੇ ਵਿੱਚੋਂ ਤਾਂ ਹੀ ਅਸੀਂ ਉੱਥੇ ਨੂੰ ਮੁੜ ਮੁੜ ਭੱਜਦੇ ਤੇ ਕੁਦਰਤ ਨੇ ਜੇਹੀ ਚੀਜ਼ ਬਣਾਈ ਫਲਾਂ ਨੂੰ ਹਜ਼ਾਰਾਂ ਹੀ ਮੀਲ ਦੇ ਜਦ ਖਾਦਾ ਪੀਤਾ ਉਹਦਾ ਹਾਜ਼ਮ ਹੋ ਗਿਆ ਉਹਨੇ ਉੱਡਦੇ ਨੇ ਖਾਦਾ ਪੀਤਾ ਆਪਣਾ ਦਾਣਿਆਂ ਦੇ ਰੂਪ ਵਿੱਚ ਧਰਤੀ ਤੇ ਵਖੇੜਦਾ ਉਥੋਂ ਦੁਬਾਰਾ ਫੇਰ ਇੱਕ ਧਰਤ ਤੋਂ ਦੂਜੀ ਧਰਤ ਦੇ ਦੂਜੇ ਪਾਸੇ ਇੱਕ ਜਗ੍ਹਾ ਤੋਂ ਦੂਜੇ ਪਾਸੇ ਜਾ ਕੇ ਵੀ ਗਿਰਿਆ ਤੇ ਉੱਥੇ ਕੁਦਰਤ ਸ਼ੁਰੂ ਹੋ ਗਈ। ਇਉਂ ਲਿਖਣ ਪੜਨ ਦੀਆਂ ਗੱਲਾਂ ਕਿਸਮ ਤਾਂ ਗੱਲਾਂ ਪਰਲੇ ਬਣਿਆ ਪਰ ਕਿਸੇ ਵੀ ਧਰਤ ਤੇ ਜਾ ਕੇ ਤੁਸੀਂ ਮੌਲ ਹੋ ਉਸ ਧਰਤ ਨਾਲ ਤੁਹਾਡਾ ਵੱਡਾ ਸਬੰਧ ਹੈ। ਜੇ ਅਸੀਂ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਇਸ ਧਰਤ ਤੇ ਵਸ ਗਏ ਕੁਝ ਨਾ ਕੁਝ ਸੇਮ ਕੁਝ ਨਾ ਕੁਝ ਖਾਸ ਸਾਨੂੰ ਕਿਉਂ ਲੱਗਦਾ ਕਿਉਂਕਿ ਧਰਤ ਤੇ ਇੱਕ ਹੈ। ਇਹੀ ਜੰਗਲ, ਇਹੀ ਬਿਆਬਾਨ, ਇਹੀ ਫਲ ਬੂਟੇ, ਇਹੀ ਮਧੂਮੱਖੀਆਂ ਦਾ ਪ੍ਰਾਗਣ, ਇਹੀ ਜਾਨਵਰ ਇਹ ਜੇ ਸਾਰਾ ਕੁਝ ਅਸੀਂ ਉੱਥੇ ਵੇਖਦੇ ਆਏ ਫਰਕ ਹੋ ਸਕਦਾ ਪਰ ਕੁਦਰਤ ਕੁਦਰਤ। ਕੁਦਰਤ ਦੇ ਵਿੱਚ ਸਮੋਹੇ ਹੀ ਸਵਾਦ ਆਉਂਦਾ ਹੈ ਇਸ ਪਦਾਰਥਵਾਦੀ ਯੁੱਗ ਤੋਂ ਹੁਣ ਭੱਜ ਕੇ ਕਹਿੰਦੀ ਹੈ ਚੱਲੀਏ ਕਾਂਤਵਾਸ 10 ਦਿਨ ਰਹਿ ਕੇ ਆਈਏ ਉਹ ਕਿਤੇ ਮੈਡੀਟੇਸ਼ਨੇ ਕਰਾਈਏ 10 ਦਿਨ ਮੂੰਹ ਬੰਦ ਹੋਵੇ ਬੋਲੀਏ ਹੀ ਨਾ ਅੱਜ ਸੁਨੇਹਾ ਮੈਂ ਅਕਸ਼ ਕੁਮਾਰ ਦੀ ਇੱਕ ਵੀਡੀਓ ਵੇਖ ਰਿਹਾ ਸੀ ਉਹ ਕਹਿੰਦਾ ਮੈਂ 14 ਦਿਨ ਕਿਤੇ ਕੇਰਲਾ ਦੇ ਆਯੁਰਵੇਦ ਦੇ ਆਸ਼ਰਮ ਦੇ ਵਿੱਚ ਕੱਟੇ ਜਿੱਥੇ ਮੈਂ ਆਪਣੇ ਬ੍ਰਾਂਡਡ ਕੱਪੜੇ ਲਾ ਕੇ কুর্তা ਪਜਾਮਾ ਚਿੱਕਾ ਪਾ ਲਿਆ ਫੋਨ ਸੈਕਟਰੀ ਮੇਰੀਆਂ ਲੈਂਬਰਗੀਨੀਆ ਬੰਬੇ ਤੇ ਉਹ ਕੰਕਰੀਟ ਦੇ ਪਹਾੜ ਛੱਡ ਕੇ ਮੈਂ ਅੱਜ 14 ਦਿਨਾਂ ਬਾਅਦ ਇੰਨਾ ਤਰੋਤਾਜ਼ਾ ਮਹਿਸੂਸ ਕਰ ਰਿਹਾ ਇੱਕ ਤਾਂ ਮੈਂ ਉਹ ਖਾਂਦਾ ਉਹਨਾਂ ਨੇ ਮੈਨੂੰ ਉਹ ਖੁਲਾਇਆ ਜਿਹੜਾ ਕੁਦਰਤ ਵੱਲੋਂ ਦਿੱਤਾ ਗਿਆ ਤੇ ਮੈਨੂੰ ਕੁਝ ਸੋਚ ਨਾ ਆਈ ਆਪਣੀ ਨੀਂਦੇ ਉੱਠਣਾ ਆਪਣੀ ਨੀਂਦੇ ਉੱਠਣਾ ਕੋਈ ਟੈਲੀਵਿਜ਼ਨ ਨਹੀਂ ਕੋਈ ਫੋਨ ਨਹੀਂ ਕੋਈ ਇੰਟਰਨੈਟ ਨਹੀਂ ਕਹਿੰਦਾ ਮੈਨੂੰ ਇਉਂ ਲੱਗਦਾ ਯਾਰ ਅਸਲ ਜ਼ਿੰਦਗੀ ਉਹ ਇਹ ਹੈ ਕਹਿੰਦਾ ਜਿਹਨਾਂ ਦੇਸ਼ਾਂ 'ਚ ਤੁਸੀਂ ਬੈਠ ਕੇ ਜਿਹਨਾਂ ਦੀਆਂ ਦਵਾਈਆਂ ਬੂਟੀਆਂ ਦੇ ਨਾਲ ਤੁਸੀਂ ਤਕੜੇ ਹੁੰਦੇ ਫਿਰਦੇ ਹੋ ਕਹਿੰਦਾ ਇੱਥੇ 100 ਬੰਦੇ ਦੀ ਜਗ੍ਹਾ 'ਚ ਮੈਂ ਇਕੱਲਾ ਹੀ ਸੀ 92 ਉਹ ਪਿਆ ਇਲਾਜ ਉਹ ਕਰਾਉਣਾ ਆਇਆ ਸੀ ਕੁਦਰਤ ਦੇ ਨੇੜੇ ਰਹਿ ਕੇ ਬਹੁਤ ਆਰਾਮ ਜਦ ਵੀ ਥੋੜਾ ਜਿਹਾ ਸਮਾਂ ਕੱਢ ਕੇ ਕੁਦਰਤ ਦੇ ਨਾਲ ਗੱਲਾਂ ਕਰਿਆ ਕਰੋ ਕੋਈ ਵੀ ਜਗ੍ਹਾ ਇਸ ਦੇਸ਼ ਦੇ ਵਿੱਚ ਕਮੀ ਨਹੀਂ ਹੈ ਕਿਉਂਕਿ ਅਸੀਂ ਮੌਲੇ ਹੀ ਵਿੱਚੋਂ ਕੁਦਰਤ ਦੇ ਨਾਲ-ਨਾਲ ਰਹਿ ਕੇ ਆਰਾਮ ਮਿਲਦਾ ਤਾਂ ਹੀ ਸਿੰਦਰ ਸਰਤਾਜ ਨੇ ਫੁੱਲਾਂ ਦੀ ਗੱਲ ਕੀਤੀ ਵਪਾਰਕ ਸੰਦੇਸ਼ ਅੱਜ ਸ਼ਿਵਰਾਤਰੀ ਐ ਪੰਜਾਬ ਦੇ ਵਿੱਚ ਸ਼ਿਵਰਾਤਰੀ ਬਹੁਤ ਜ਼ੋਰ ਨਾਲ ਪਿੰਡਾਂ 'ਚ ਮਨਾਈ ਜਾਂਦੀ ਐ ਪਹਿਲਾਂ ਇੱਕ ਮਹੀਨਾ ਦੇਸੀ ਘਿਓ ਦੇ ਟੀਨ ਪਿੰਡ ਦੇ ਵਿੱਚ ਜਦ ਢਾਲ ਇਕੱਠੀ ਹੁੰਦੀ ਐ ਚੰਗੇ ਲਾਣੇ ਤੋਂ ਕਹਿੰਦੇ ਪੂਰਾ ਟੀਨ ਹੀ ਲੈਣਾ ਤੇ ਕੋਈ ਅੱਧਾ ਕਿਸੇ ਤੋਂ ਕਿਲੋ ਕੋਈ ਮਾਮਾ ਘਰ ਦਾ ਘਿਓ ਜੋੜ ਕੇ ਦੇਉਂਦੇ ਤੇ ਫਿਰ ਇੱਕ ਦਿਨ ਪਹਿਲਾਂ ਉੜੇ ਜਿਹੜੇ ਆ ਬਣਾਉਣੇ ਸ਼ੁਰੂ ਹੁੰਦੇ ਆ ਤੇ ਖੀਰ ਦੇ ਕੜਾਹੇ ਸਾਰਾ ਪਿੰਡ ਤਾ ਕੇ ਆਉਂਦਾ ਤੇ ਆਰਤੀ ਹੁੰਦੀ ਆ ਤੇ ਦੂਜੇ ਦਿਨ ਫਿਰ ਸਾਰਾ ਰਾਹੀ ਪੰਦੀ ਸਾਰਾ ਪਿੰਡ ਆ ਕੇ ਸ਼ਕਤ ਦਾ ਉਥੇ ਸ਼ੇਵ ਦੇੰਦ ਇਹ ਟੋਟਾ ਸਾਂਝਾ ਸਾਡੀਆਂ ਪੰਜਾਬ ਦੇ ਇਸ ਵਿਰਸੇ ਦੇ ਵਿੱਚ ਜੇ ਗੁਰਾਂ ਦੇ ਦਿਨ ਵੱਡੇ ਮਨਾਏ ਜਾਂਦੇ ਆ ਉਥੇ ਜਨਮਸ਼ਟਮੀ ਤੇ ਸ਼ਿਵਰਾਤਰੀ ਦੇ ਤਿਹਾਰ ਜਿਹੜੇ ਬਹੁਤ ਜ਼ੋਰ ਨਾਲ ਮਨਾਏ ਜਾਂਦੇ ਜਾ ਸੁਨੇਹਾ ਕੋਈ ਵੀ ਸੇਰੇ ਬੰਨ ਕੇ ਟੁੱਕਦਾ ਜਨ ਚੜਦਾ ਤੇ ਸਾਰੇ ਹੀ ਮੁਕੱਦਸ ਥਾਨ ਜਿਹੜੇ ਨੇ ਜਿਹੜੇ ਪਿੰਡ ਦੇ ਵਿੱਚ ਨੇ ਜਾਂ ਮੰਦਰ ਨੇ ਤੇ ਜਾਂ ਫਿਰ ਗੁਰਦੁਆਸਾਹਬ ਨੇ ਸਾਰਿਆਂ ਦੇ ਬੱਥੇ ਟੀਕ ਕੇ ਫੇਰ ਬੰਦੇ ਨੂੰ ਤੋੜ ਦਿਆ ਦੋ ਘੰਟੇ ਸਵੇਰੇ ਤੋਰੀ ਫਿਰਦੇ ਸਾਰੀ ਜਗ੍ਹਾ ਪਾਈ ਇੱਥੇ ਵੀ ਇੱਥੇ ਵੀ ਮਾਮਾ ਨਾਲ ਹੁੰਦੀਆਂ ਚਾਚੀਆਂ ਧਾਈਆਂ ਨਾਲ ਸ਼ਿਵਰਾਤਰੀ ਦਾ ਜਿਹੜੀਆਂ ਸਭ ਨੂੰ ਮੁਬਾਰਕਾਂ ਬਹੁਤ ਵਧੀਆ ਦਿਨ ਹੈ ਸ਼ਿਵਜੀ ਦਾ ਦਿਨ ਹੈ ਤੇ ਲੋਕੀ ਨੂੰ ਬਹੁਤ ਜ਼ੋਰ ਨਾਲ ਮਨਾਉਂਦੇ ਰਪਿੰਦਰ ਹਾਂਡਾ ਤਖਤ ਪੋਸ਼ ਤੇ ਬੈਠੀ ਆ ਜ਼ਿੰਦਗੀ ਦੀ ਦਾਸਤਾ ਇੱਕ ਸੱਜ ਬਈ ਮਟਿਆਰ ਪਾ ਰਹੀ ਹੈ ਕਿ ਜ਼ਿੰਦਗੀ ਕੀ ਹੈ ਤੇ ਕੀ ਕਰਦਾ ਫਿਰਦਾ ਪਹਿਲਾਂ ਗੇੜੇ ਕੱਢਦਾ ਐ ਇੱਥਨੇ ਬੋਰ ਚੱਲ ਚੱਕ ਕੇ ਬਾਹਰ ਨੂੰ ਤੁਰ ਪੈਣਾ ਸੋ ਪੰਜਾਬ ਦੇ ਪਿੰਡਾਂ ਦੇ ਵਿੱਚ ਹੁੰਦੀ ਵੀ ਗੱਲ ਇਹੀ ਹੈ ਕੰਪਲੇਂਟ ਵੀ ਇਹੀ ਐ ਮੋਸਟਲੀ ਇਸਤਰੀਆਂ ਦੀ ਇਹ ਸਾਨੂੰ ਸਮਾਂ ਨਹੀਂ ਮਿਲਦਾ ਬੰਦਿਆਂ ਦਾ ਸੋਸ਼ਲ ਸਰਕਲ ਹੋਰ ਹੈ ਕੰਮਕਾਰ ਤੋਂ ਬਾਅਦ ਫੇਰ ਉਹ ਭੱਜੇ ਫਿਰਦੇ ਆ ਜਿਹੜਾ ਦੋਸਤਾਂ 'ਚ ਬਹਿਣ ਦੀ ਉਹਨਾਂ ਨੂੰ ਲਲਕ ਹੁੰਦੀ ਹੈ ਪਰ ਸਮੇਂ ਦੇ ਵਿੱਚੋਂ ਹੀ ਸਮਾਂ ਕੱਢਣਾ ਪੈਂਦਾ ਹੈ ਰੱਖਣਾ ਪੈਂਦਾ ਸਾਰਾ ਕੁਝ ਹੁਣ ਤੁਹਾਡੀ ਜੀਓਪੈਥਿਕ ਸਟ੍ਰੈਸ ਕਰਦੇ ਵਿੱਚ એનર્ਜੀ ਦੀ ਗੱਲ ਗੁਰਜਤ ਸਿੰਘ ਹੁਣੀ 2 ਹਫ਼ਤੇ ਵੱਧ ਕਰਦੇ ਆ ਅੱਜ ਉਸੇ ਵਿਸ਼ੇ ਤੇ ਐਨਰਜੀ ਬਾਰੇ ਤੇ ਘਰ ਦੇ ਵਿੱਚ ਐਨਰਜੀ ਸੈੱਟ ਕਿਵੇਂ ਕੀਤੀ ਜਾਂਦੀ ਹੈ ਉਸੇ ਬਾਰੇ ਗੱਲ ਕਰ ਲਈ ਗੁਰਜਤ ਸਿੰਘ ਨਾਲ ਨੇ ਗੁਰਜਤ ਸਿੰਘ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਪਿਆਰ ਭਰੀ ਨਿੱਗੀ ਸਤਿ ਸ਼੍ਰੀ ਅਕਾਲ ਇਸ ਖੋਜ ਦੇ ਵਿੱਚ ਇਸ ਥੈਰੇਪੀ ਦੇ ਵਿੱਚ ਕੋਈ ਨਵੀਂ ਖਬਰ ਉੱਥੋਂ ਸ਼ੁਰੂ ਕਰੋ ਹਾਂਜੀ ਬਾਕੀ ਸਾਡੇ ਡਿਫਰੈਂਟ ਡਿਫਰੈਂਟ ਰਿਸਰਚਸ ਟਾਈਮ ਟੂ ਟਾਈਮ ਹੁੰਦੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਇੱਕ ਹੈਲਥ ਸੁਸਾਇਟੀ ਹੈਗੀ ਐ ਡਲਵਿਚ ਹੈਲਥ ਸੁਸਾਇਟੀ ਦੇ ਨਾਂ ਦੇ ਉੱਪਰ ਉਹਨਾਂ ਦੀ ਉਹਨਾਂ ਦੇ ਉਹਨਾਂ ਦੇ ਡਾਟੇ ਬੜੇ ਜਿਹੜੇ ਹੈਗੇ ਆ ਕੱਖਾਂ ਖੋਲਣ ਵਾਲੇ ਹੈਗੇ ਆ ਕਿਉਂਕਿ ਸਭ ਤੋਂ ਪਹਿਲੇ ਉਸ ਡਾਟੇ ਦਾ ਮੈਂ ਜ਼ਿਕਰ ਕਰਦਾ ਸਭ ਤੋਂ ਪਹਿਲੇ ਤਾਂ ਸਾਨੂੰ ਇੱਕ ਵਾਰੀ ਫਿਰ ਮੈਂ ਥੋੜਾ ਰਿਮਾਈਂਡਰ ਦੇ ਦਵਾ ਕਿ ਅਸੀਂ एवरीथिंग ਜਦੋਂ ਮੈਂ ਇਹ ਗੱਲ ਕਰਦਾ एवरीथिंग ਇਜ਼ ਇਜ਼ ਜਦੋਂ ਮੈਂ ਇਹ ਕਹਿੰਦਾ ਕਿ ਸਭ ਕੁਝ એનર્ਜੀ ਹੈ ਔਰ ਇਹ ਬ੍ਰਹਮੰਡ ਜਿਹੜਾ ਹੈ ਯੂਨੀਵਰਸ ਹੈ ਸਮਥਿੰਗ ਇੱਕ ਜਿਹਦਾ ਇੱਕ ਸੈਂਟਰ ਹੈ ਇਹਦਾ ਮਤਲਬ ਹੈ ਅਸੀਂ ਕਿਤੇ ਵੀ ਕਿਸੇ ਚੀਜ਼ ਤੋਂ ਅਲੱਗ ਨਹੀਂ ਹੈਗੇ ਹਰ ਚੀਜ਼ ਸਾਨੂੰ ਇਫੈਕਟ ਕਰਦੀ ਹੈ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅੱਜ ਕੱਲ੍ਹ ਕਈ ਲੋਕ ਪ੍ਰਾਣਾਯਾਮ ਕਰਦੇ ਹਨ ਪ੍ਰਾਣਾਯਾਮ ਕੀ ਹੈ ਵੀ ਸਵਾਸ ਨੂੰ ਕਿਸੇ ਤੰਗ ਨਾਲ ਲੈਣਾ ਜਾਂ ਕਪਾਲ ਬਾਤੀ ਸਾਰਾ ਕਰਦੇ ਆ ਬੇਸਿਕਲੀ ਕੀ ਕਰ ਰਹੇ ਕਿ એનર્ਜੀ ਨੂੰ ਰੈਗੂਲੇਟ ਕਰ ਰਹੇ ਹਨ ਨੂੰ ਰੈਗੂਲੇਟ ਕਰਨ ਦੇ ਨਾਲ ਕਈਆਂ ਨੇ ਬੜੇ ਅਮੇਜ਼ਿੰਗ ਰਿਜ਼ਲਟਸ ਦੇਖਿਆ ਕਿ એનર્ਜੀ ਨੂੰ ਰੈਗੂਲੇਟ ਕਰਨ ਦੇ ਨਾਲ ਸਰੀਰ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦਾ ਸਰੀਰ ਕੀ ਹੈ ਸਰੀਰਕ ਨਾ ਰੈਗੂਲੇਟ ਕਰਦੇ ਆ ਤੇ ਸਰੀਰ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦਾ ਸੋ ਦੈਟ ਮੀਨਸ ਐਸੇ ਤਰੀਕੇ ਨਾਲ ਮੈਂ ਪਹਿਲੇ ਵੀ ਕੁਵਰੇ ਐਗਜ਼ਾਮਪਲ ਦਿੱਤਾ ਹੈਗਾ ਜਿਹੜੇ ਕੋਈ ਫੇਰ ਦੱਸ ਦਵਾਂ ਕਿ ਜਿੱਦਾਂ ਆਪਾਂ ਪੂਰਨਮਾਸ਼ੀ ਨੂੰ ਇੰਪੋਰਟੈਂਸ ਦਿੰਦੇ ਆ ਜਾਂ Hindu math ਦੇ ਵਿੱਚ ਸ਼ਿਵਰਾਤਰੀ ਨੂੰ ਇੰਪੋਰਟੈਂਸ ਦੇ ਦਿੰਦੇ ਆ ਤੇ ਮੂਨ ਜਿਹੜਾ ਹੈ ਉਹ ਉਹਦੀ ਵੇਅ ਸਾਡੇ ਤੇ ਕਿਵੇਂ ਇਫੈਕਟ ਕਰਦੀਆਂ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਵਾਰ-ਬਾਟੇ ਆਉਂਦੇ ਆ ਪੂਰਨਮਾਸ਼ੀ ਵਾਲੇ ਦਿਨ ਸੇਮ ਇਫੈਕਟ ਸਾਡੀ ਬਾਡੀ ਦਾ ਹੁੰਦਾ ਇਹ ਮੈਂ ਬਾਰ-ਬਾਰ ਕਿਉਂ ਕਹਿ ਰਿਹਾ ਤਾਂ ਕਿ ਅਸੀਂ ਸਾਰੇ ਸਮਝ ਸਕੀਏ ਕਿ ਬੇਸਿਕਲੀ એનર્ਜੀ ਜਿਹੜੀ ਹੈ ਉਹ ਇਹ ਵਰ ਜੇ ਮੂਨ ਸਾਡੇ ਤੋਂ ਬਹੁਤ ਦੂਰ ਹੈ ਚੰਦਰਮਾ ਬਹੁਤ ਦੂਰ ਹੈ ਚੀਜ਼ਾਂ ਬਹੁਤ ਦੂਰ ਨਜ਼ਰ ਆਉਂਦੀਆਂ ਉਹ એનર્ਜੀ ਸਾਨੂੰ ਇਫੈਕਟ ਕਰਦੀ ਹੈ ਜੇ ਸਵਾਸਾਂ ਨੂੰ ਠੀਕ ਪ੍ਰੋਪਰ ਤਰੀਕੇ ਨਾਲ ਗਤੀ ਦੇਣ ਨਾਲ ਸਰੀਰ ਦੇ ਵਿੱਚ ਠੀਕ ਸਿਸਟਮ ਤੇ ਫਰਕ ਪੈਂਦਾ ਉਸ ਤਰ੍ਹਾਂ ਹੀ ਜਿਹੜੇ ਸਾਡੇ ਸਟਰਕਚਰ ਅੰਦਰ ਕਿਤੇ ਵੀ ਉਹਦੇ ਵਿੱਚ ਜਿਹੜੀ એનર્ਜੀ ਹੈ ਅਗਰ ਉਹਨੂੰ ਅਸੀਂ ਠੀਕ ਜਿਕੇ ਨਾਲ ਰੈਗੂਲੇਟ ਕਰਦੇ ਹਾਂ ਤੇ ਉਹਦੇ ਨਾਲ ਉਹਦੇ ਨਾਲ ਆਪਾਂ ਨੂੰ ਜਿਹੜਾ ਸਲੋਲੀ ਫਰਕ ਪੈਣਾ ਸੁਭਾਵਿਕ ਜਿਵੇਂ ਜਿਵੇਂ ਅਸੀਂ ਪ੍ਰਾਣਾ ਯਮ ਕਰਦੇ ਹਾਂ ਇਹ ਨਹੀਂ ਕਿ ਅੱਜ ਇੱਕ ਦਿਨ ਕਰ ਲਿਆ ਤੇ ਕੱਲ ਨੂੰ ਸੋਚਾਂਗੇ ਵੀ ਠੀਕ ਹੋ ਗਿਆ ਬਿਲਕੁਲ ਹੀ ਮੇਰਾ ਇੱਕ ਦੋਸਤ ਆ ਉਹਦੇ ਫਾਦਰ ਦੀ ਆਕਰੀਆਂ ਮੈਨੂੰ 65% ਸੀ ਜਾਂ ਸਮਥਿੰਗ ਲਾਈਕ 댓 ਕਮੇਨ ਲੱਗੇ ਨੂੰ ਬਟ ਨਾਓ ਦੀ ਰਿਜ਼ਲਟਸ ਵਰ ਅਮੇਜ਼ਿੰਗ 36% ਤੋਂ ਵੀ ਘੱਟ ਥੱਲੇ ਤੇ ਆ ਗਈ ਸੀ ਬਿਕਾਜ਼ એનર્ਜੀ ਵਰਕਸ ਵੈਰੀ ਸਲੋਲੀ ਬਟ ਫਰ ਸ਼ੋਰ ਹੌਲੀ ਹੌਲੀ ਵਰਕ ਕਰਦੀ ਹੈ ਹੁਣ ਆਪਾਂ ਥੋੜੀ ਜੀ ਤੁਹਾਨੂੰ ਗੱਲ ਦੱਸਦੇ ਆ ਵੀ ਜਿਸ ਤਰ੍ਹਾਂ ਗਲਬੀ ਹੈ ਇਹਨਾਂ ਨੇ 25000 ਬੰਦਿਆਂ ਦੇ ਉੱਪਰ ਐਕਸਪੈਰੀਮੈਂਟ ਕਰਕੇ ਦੇਖਿਆ ਸੋ ਇਹਨਾਂ ਦੀ ਫਾਈਂਡਿੰਗਸ ਆ ਐਨੀਬਾਡੀ ਕੈਨ ਰੀਡ ਫਸਟ ਆਫ ਆਲ ਇਹ ਮੇਰੀ ਨਹੀਂ ਤੁਸੀਂ ਗਲਬੀ ਦੇ ਇਹ ਕਿਤੇ ਵੀ ਪਰਸਾ ਕਦੇੋ ਕਿ ਉਹ ਕਹਿੰਦਾ ਹੈ ਕਿ ਵੀ 100 ਜਿਹੜਾ ਰੀਲੈਪਸ ਹੁੰਦਾ 100% ਸੈਕੰਡਰੀ ਕੈਂਸਰ ਹੈਪਨਸ ਉਹੋ ਜੇ ਕਾਰਨ ਦੇ ਵਿੱਚ ਜਿੱਥੇ ਕਿ ਇਹ ਹਾਈ ਫ੍ਰੀਕੁਐਂਸੀ ਰੇਡੀਏਸ਼ਨ ਹੁੰਦੀਆਂ ਨਾ ਕੋਈ ਇਹ ਨਾ ਸਮਝ ਲਵੇ ਇਕੱਲਾ ਹੀ ਕਾਰਨ ਮੈਨੂੰ ਬੜਾ ਸਪੈਸੀਫਿਕ ਹੋਣਾ ਪੈਂਦਾ ਕਿ ਦਿਸ ਇਜ਼ ਆਲਸੋ ਵਨ ਆਫ ਦੀ ਰੀਜ਼ਨ 95% ਕੈਂਸਰ ਜਿਹੜੇ ਲੋਕ ਇਹਦੇ ਉੱਪਰ ਸੌਂਦੇ ਹਨ ਜੀਓਪੈਥਿਕ ਦੇ ਉੱਪਰ ਪਰ 95% ਬੱਚੇ ਜਿਹੜੇ ਹਾਈਪਰ ਐਕਟਿਵ ਹੈਗੇ ਆ ਉਹਨਾਂ ਵਾਸਤੇ ਵੀ ਇਹ ਯੋਗਦਾਨ ਪਾਉਂਦੀ ਹੈ 80% ਗਰਗਵਰ ਮਿਸਕਾਰੇजेस 80% ਕਨਸੀਵ ਨਾ ਕਰ ਪਾਣਾ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਰਿਸਰਚ ਕਹਿੰਦੀ ਉਹਨਾਂ ਨੇ 25000 ਬੰਦੇ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੋ ਟਾਈਮ ਟੂ ਟਾਈਮ ਡਿਫਰੈਂਟ ਇੱਕ ਇੱਕ ਡਿਫਰੈਂਟ ਵੇ ਆਫ ਸਟੱਡਿੰਗ ਹੈ ਹੁਣ ਇੰਡੀਆ ਦੇ ਵਿੱਚ ਵੀ ਇੱਕ ਹੋ ਕੇ ਛਟੀ ਹੈ ਜਿਹਦੇ ਵਿੱਚ ਕਿ ਜੀਓਫਿਜ਼ਿਕਸ ਸਟਾਫ ਜਾਂ ਇਵਨ ਇਵਨ ਜਿਹੜੀਆਂ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਜਿਹੜੀਆਂ ਗਿਲ ਸਾਹਿਬ ਤੁਸੀਂ ਇੰਡੀਪੈਂਡੈਂਟ ਪ੍ਰੋਗਰਾਮ ਵੀ ਲਿਆ ਚੁੱਕੇ ਹੋ ਮੈਂ ਵੀ ਗੱਲ ਕਰ ਚੁੱਕਾ ਹੈਗਾ ਕਿ ਸੈਲਫ ਦੀ ரேਡੀਏਸ਼ਨਸ ਨੂੰ ਕਿਵੇਂ ਫਟਾ ਦਿਆਂ ਪਰ ਜਦ ਕਰ ਗਿਆ ਹੁਣ ਬੰਬੇ ਚ ਹੋ ਕੇ ਆ TAI ਬੜੀ ਲਾਰ ਸਕੇਲ ਦੇ ਉੱਪਰ ਸੋ ਕਿਸੇ ਵੀ ਚੀਜ਼ ਨੂੰ ਸਮਝਣ ਵਾਸਤੇ ਸਟਰਕਚਰ ਨੂੰ ਸਮਝਣ ਵਾਸਤੇ ਚਾਰ ਚੀਜ਼ਾਂ ਹੈਗੀਆਂ ਫ੍ਰੀਕਵੈਂਸੀ ਦੇਖੋ ਯੂਨੀਵਰਸਲ ਲੈਂਗੁਏਜ ਨਾ ਹਿੰਦੀ ਹੈ ਨਾ ਪੰਜਾਬੀ ਹੈ ਨਾ ਗੁਰਮੁਖੀ ਕੋਈ ਉਹਦੀ ਲੈਂਗੁਏਜ ਨਹੀਂ ਹੈ ਉਹਦੀ ਲੈਂਗੁਏਜ ਹੈ ਫ੍ਰੀਕਵੈਂਸੀ ਦੇਖੋ ਜਦੋਂ ਆਪਾਂ ਇੱਕ ਨਵੀਂ ਥਿਊਰੀ ਅੱਜ ਕੱਲ ਆਈ ਹੈ ਬਹੁਤ ਪਪੂਲਰ ਹੈ ਖਾਸ ਕਰਕੇ ਅੱਜ ਦੇ ਜਿਹੜੇ ਬਹੁਤ ਬੱਚੇ ਬਹੁਤ ਇਹਦੀ ਗੱਲ ਕਰਦੇ ਹਜੇ ਆ ਕਿ ਇੰਟੈਂਸ਼ਨ ਇਜ਼ एवरीथिंग ਉਗੰਦੀ ਦੇ ਸੀਕ੍ਰੀਟ ਇਸ ਆਊਟ ਇੰਟੈਂਸ਼ਨ ਇਜ਼ ਅ ਸੋ ਮਨੀ ਬੁక్స్ ਕਿੰਨੀਆਂ ਬੁక్స్ ਲਿਖੀਆਂ ਗਈਆਂ ਪਰ ਇੰਟੈਂਸ਼ਨ ਕੀ ਇੰਟੈਂਸ਼ਨ ਇੱਕ ਮੇਰਾ ਬ੍ਰੇਨ ਜੋ ਸੋਚਦਾ ਇਮੋਸ਼ਨਸ ਇੱਕ ਹੈ ਪਰ ਬੇਸਿਕਲੀ ਦੋ ਹੀ ਇਮੋਸ਼ਨਸ ਜਿਹੜੀਆਂ ਹੈਗੀਆਂ ਉਹ ਕਨਸੀਡਰ ਕੀਤੀ ਜਾਂਦੀਆਂ ਲਵ ਔਰ ਫੀਅਰ ਜਿੱਦਾਂ ਹੀ ਤੁਹਾਡੇ ਮਨ ਦੇ ਵਿੱਚ ਕੋਈ ਥਾਟ ਆਇਆ ਜਾਂ ਤਾਂ ਤੁਸੀਂ ਪ੍ਰੇਮਪੂਰਨ ਤਰੀਕੇ ਨਾਲ ਉਹਨੂੰ ਅਕਸੈਪਟ ਕਰੋਗੇ ਜਾਂ ਤੁਸੀਂ ਉਸ ਬਾਰੇ ਫੀਅਰਫੁਲ ਹੋਵੋਗੇ ਕਿ ਮੈਂ ਇਹ ਕੰਮ ਕਰਨ ਲੱਗਾ ਜਦੋਂ ਖੁਸ਼ੀ ਲੱਗਦੀ ਆਮ ਹੈਪੀ ਟੂ ਡੂ ਇਟ ਮਾਈਂਡ ਕੋਪਰੇਟ ਕਰੇਗਾ ਉਹ ਕਹਿੰਦੇ ਆ ਵੀ ਲੋਅਰ ਪੋਰਸ਼ਨਸ ਜਿਹੜੇ ਆ ਉਹ ਫੀਲ ਕਰਦੇ ਆ ਅੱਪਰ ਪੋਰਸ਼ਨ ਥੋਟ ਦਿੰਦਾ ਜਿਹੜਾ ਜਿਹੜਾ ਸੈਂਟਰ ਲੈਵਲ ਆ ਜਿਹਨੂੰ ਅਸੀਂ ਫਿਜ਼ੀਕਲੀ ਕਹਿੰਦੇ ਹਾਰਟ ਸੈਂਟਰ ਆ ਉਹ ਲੋਕ ਕਹਿੰਦੇ ਆ ਕਿ ਜੀ ਉਹ ਇਟ ਇ ਸੋ ਪਾਵਰਫੁਲ ਡਿਪੈਂਡਿੰਗ ਔਨ ਯੂਰ ਥੋਟ ਕਿ ਤੁਸੀਂ ਉਹਨੂੰ ਫੀਅਰਫੁਲ ਤਰੀਕੇ ਨਾਲ ਲੈ ਰਹੇ ਹੋ ਕਿ ਲਵਿੰਗ ਤਰੀਕੇ ਨਾਲ ਲੈ ਰਹੇ ਹੋ ਉਹੋ ਜਿਹਾ ਮੈਸੇਜ ਯੂਨੀਵਰਸ ਨੂੰ ਭੇਜਦਾ ਉਹੋ ਜਿਹੇ ਇਨਸੀਡੈਂਟਸ ਤੁਹਾਡੀ ਲਾਈਫ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦੇ ਆ ਇਹ ਗੱਲ ਅੱਜਕੱਲ ਕੋਮਨ ਹੋ ਰਹੀ ਐਵਰੀਬਾਡੀ ਇਸ ਟਾਕਿੰਗ ਅਬਾਊਟ ਇਟ ਦੇਸ ਮੈਟਾ ਹੈਲਥ ਜਿਹੜੇ ਕਹਿ ਰਹੇ ਆ ਕਿ ਸਿਰਫ ਥੌਟ ਦੀ ਐਨਰਜੀ ਜਿਹੜੀ ਹੈ ਇਕੱਲੀ ਇਕੱਲੀ ਥੌਟ ਦੀ ਐਨਰਜੀ ਜਿਹੜੇ ਚੀਜ਼ਾਂ ਨੂੰ ਠੀਕ ਕਰ ਸਕਦੀ ਹੈ ਮੈਂ ਸਾਰਾ ਕੁਝ ਕਿਉਂ ਕਹਿ ਰਿਹਾ ਮੈਂ ਸਾਰਾ ਕੁਝ ਇਸ ਕਰਕੇ ਕਹਿ ਰਿਹਾ ਕਿ ਜਿੱਥੇ ਅਸੀਂ ਰਹਿੰਦੇ ਆ ਜਾਂ ਜਾਂ ਸਾਡਾ ਸ਼ਰੀਰ ਹੈ ਜਾਂ ਜਿਹੜੇ ਐਟਮੋਸਫੀਅਰ 'ਚ ਅਸੀਂ ਰਹਿੰਦੇ ਆ ਜਿੱਥੇ ਅਸੀਂ ਦੁਬਾਰਾ ਬਣਾ ਕੇ ਜਿਹਨੂੰ ਅਸੀਂ ਸੋ ਕਾਲਡ ਘਰ ਕਹਿੰਦੇ ਆ ਉਹ ਘਰ ਦੇ ਵਿੱਚ ਅਗਰ ਪ੍ਰੋਪਰ ਸਵਾਸ ਲੈਣ ਨਾਲ ਥੌਟ ਪ੍ਰੋਸੈਸ ਦੀ ਐਨਰਜੀ ਨਾਲ ਇਲੈਕਟ੍ਰੋਮੈਗਨੈਟਿਕ ਫੀਲਡ ਆ ਤੁਹਾਡੇ ਆਪਣੇ ਅਗਰ ਜਾਂ ਮੂਨ ਇੰਨਾ ਦ ਦੇ ਰਿਵੀਓ ਦੀ એનર્ਜੀ ਸਾਨੂੰ ਇਫੈਕਟ ਕਰਦੀਆਂ ਤੇ ਸਿਰਫ ਬੜੇ ਅਰਗੂਮੈਂਟ ਇਸੇ ਕੀ ਕਹਿ ਸਕਦੇ ਆ ਕਿ ਜਿਹੜੀ ਇਹ ਜ਼ਮੀਨ ਚੋਂ ਇਹ ਰੇਡੀਏਸ਼ਨਸ ਨਿਕਲਦੀਆਂ ਹੈਗੀਆਂ ਜਿਹੜੀਆਂ ਕਿ ਸਦੀਆਂ ਪੁਰਾਣੀ ਰਿਸਰਚ ਹੈ ਅੱਜ ਦੀ ਰਿਸਰਚ ਨਹੀਂ ਹੈ ਕਿ ਪੁਰਾਣੀ ਰਿਸਰਚ ਹੈ ਕਿ ਜਿਹੜੀ ਜਦੋਂ ਇਹਦੇ ਰੋਟੇਸ਼ਨ ਦੇ ਕਰਕੇ ਜਿਹੜੀ ਇਲੈਕਟ੍ਰੋਮੈਗਨੈਟਿਕ ਫੀਲਡਸ ਪੈਦਾ ਹੁੰਦੀਆਂ ਉਹ ਇਨ ਕਨੈਕਸ਼ਨ ਇਹ ਸਾਰੀ ਚੀਜ਼ਾਂ ਦੇ ਕੰਟੈਕਟ ਚ ਆਉਂਦੀਆਂ ਜਿਹੜੇ ਡੇਂਜਰਸ ਮਿਨਰਲਸ ਹੈ ਜਾਂ ਸਦੀਆਂ ਤੋਂ ਲਾਸ਼ਾਂ ਦੱਬੀਆਂ ਜਾਂ ਸਲੋ ਮੂਵਿੰਗ ਵਾਟਰ ਹੈ ਜਦੋਂ ਬਾਹਰ ਆਉਂਦੀਆਂ ਜਿਹੜੀ ਨੈਚੁਰਲ ਫ੍ਰੀਕੁਐਂਸੀ ਹੈ ਉਸ ਤੋਂ ਡਿਸਟੋਰਟ ਹੋ ਜਾਂਦੀ ਹੈ ਨੈਚੁਰਲ ਦੇ ਅਸੀਂ ਆ ਉਸ એનર્ਜੀ ਫੀਲ ਰਹਿੰਦੇ ਆ ਸਲੋਲੀ ਸਲੋਲੀ ਸਾਨੂੰ ਉਹ એનર્ਜੀ ਫੀਲ ਇਫੈਕਟ ਕਰਦਾ ਸੋ ਫੋਕਸਨੇਸ਼ਨ ਤੋਂ ਬਾਅਦ ਗੁਰਜਤ ਸਿੰਘ ਹੋਏ ਆ ਜੀ ਤੁਹਾਡੀ એનર્ਜੀ ਦੇ ਬਾਰੇ ਜਿਹੜੀ ਗੱਲਬਾਤ ਗੁਰਜਤ ਸਿੰਘ ਹੁਣੀ ਕਰ ਰਹੇ ਹੋ ਜੀਓਪੈਥਿਕ ਇੱਕ ਸਟ੍ਰੈਸ ਦੀ ਜਿਹੜੀ ਰੈਮੇਡੀ ਹੈ है, ਨਾਲ ਉਹ ਕਰਦੇ એનર્ਜੀ ਸੈੱਟ ਕਰਦੇ ਆ ਤੇ ਬਹੁਤ ਪ੍ਰਚਲਿਤ ਹੈ ਯੂਰਪੀਨ ਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਜਰਮਨੀ ਦੇ ਵਿੱਚ ਤੇ ਨਾਲ ਆਸਟਰੀਆ ਦੇ ਵਿੱਚ ਪਰ ਆਰਥਿਕ ਆਰਬਾਦੀ ਬੰਦੇ ਨਾਲ ਮਿਲਣਾ ਪੈਣਾ ਬਹੁਤ ਫਰਕ ਹੈ ਇਹ ਉਹ ਘਰ ਦੇ ਵਿੱਚ ਇਹ ਚੀਜ਼ਾਂ ਸਿੱਧ ਹੋਈਆਂ ਵੀ ਘਰ ਦੇ ਵਿੱਚ ਇਸ ਨੂੰ ਜੈ ਸੈੱਟ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਮਾਹੌਲ ਠੀਕ ਹੁੰਦਾ ਪਰ ਮਾਹੌਲ ਇਹ ਚੁਟਕੀ ਨਹੀਂ ਕੋਈ ਟੂਣਾ ਨਹੀਂ ਹੈ ਇਹ ਕੁਝ ਇਸ ਤਰ੍ਹਾਂ ਇਹ ਉੱਥੇ ਹੀ ਲਾਗੂ ਚੀਜ਼ ਹੋ ਸਕਦੀ ਜੇ ਤੁਹਾਡਾ ਮਨ ਹੋਵੇ ਜੇ ਤੁਸੀਂ ਨਿੱਜੀ ਤੌਰ ਤੇ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ ਤੇ ਫਿਰ ਉਹਦੇ ਤੇ ਸੰ ਤੇ ਪੈਸੇ ਬਰਦ ਕਰਨ ਦੀ ਜ਼ਰੂਰਤ ਨਹੀਂ ਹੈ। ਕੁਝ ਵੀ ਚੀਜ਼ ਜਿਸ ਦਾ ਨਾਮ ਹੈ ਉਹ ਐਗਜ਼ਿਸਟ ਕਰਦੀ ਐ ਇਸ ਯੂਨੀਵਰਸ ਤੇ ਕੋਈ ਉਸ ਨੂੰ ਮੰਨਦਾ ਕੋਈ ਨਹੀਂ ਮੰਨਦੇ ਤੁਹਾਡੀ ਆਪਣੀ ਵਿਸ਼ ਉਹ ਆਪਣੇ ਵੱਲੋਂ ਸਿਹਰਾ ਤੁਹਾਨੂੰ ਹਰ ਵਾਰ ਦਿੰਦੇ ਆ ਦੱਸਦੇ ਆ ਕਿ ਇਹ ਚੀਜ਼ਾਂ ਦਾ ਫਰਕ ਹੈ। ਅੱਛਾ ਸਿਹਰੇ ਨਾਲ ਬਹੁਤ ਜੋੜਿਆ ਜਾਂਦਾ ਐ ਦੀ ਗੱਲ ਜਦ ਊਰਜਾ ਦੀ ਗੱਲ ਕੀਤੀ ਜਾਂਦੀ ਤੁਸੀਂ ਪਹਿਲਾਂ ਵੀ ਦੱਸ ਕਿ ਉਹ ਸਿਹਤ ਦੇ ਨਾਲ ਬਹੁਤ ਜੋੜਿਆ ਜਾਂਦਾ ਤੇ ਬਹੁਤ ਤੁਸੀਂ ਇਹਦੇ ਪ੍ਰੈਕਟੀਕਲਸ ਦੀ ਗੱਲ ਕੀਤੀ ਆ ਕਿ ਜਰਮਨੀ ਦੇ ਵਿੱਚ ਜਾਂ ਆਸਟਰੀਆ ਦੇ ਵਿੱਚ ਜਿੱਥੇ ਲੋਕ ਜਿਨ੍ਹਾਂ ਨੂੰ ਮੁਸ਼ਕਲ ਸੀ ਫਿਰ ਉਹਨਾਂ ਨੂੰ ਉਹ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਅਲੱਗ ਉਹਨਾਂ ਦਾ ਵਾਤਾਵਰਨ ਸੀ ਡਾਕਟਰ ਪੁੱਛਦੇ ਪਹਿਲਾਂ ਤੋਂ ਰਹਿਣਾ ਕਿੱਥੇ ਆ ਇਹ ਜ਼ਿਆਦਾਤਰ ਜਰਮਨੀ ਦੇ ਵਿੱਚ ਹੀ ਪ੍ਰਚਲਿਤ ਹੈ ਕਿ ਇਹਦੀ ਪ੍ਰੈਕਟਿਸ ਇੱਧਰ ਵੀ ਸ਼ੁਰੂ ਹੋਈ ਆ ਜਰਮਨੀ 'ਚ ਜ਼ਿਆਦਾ ਪ੍ਰਚਲਿਤ ਹੈ ਜੀ ਆਸਟਰੀਆ 'ਚ ਪ੍ਰਚਲਿਤ ਹੁਣ ਹੌਲੀ-ਹੌਲੀ ਇੰਡੀਆ ਦੇ ਵਿੱਚ ਵੀ ਉਹ ਗੱਲ ਨੂੰ ਸਮਝ ਰਹੇ ਆ ਬਿਕਾਜ਼ ਉਹ ਥੋੜੀ ਜਿਹੀ ਓਪਨ ਸੋਸਾਇਟੀਜ਼ ਹੈਗੀਆਂ ਔਰ ਆਪਣਾ ਮਾਈਨ ਖੁਲਰ ਹੱਦਿਆਂ ਦੇ ਕੋ ਪਿੱਛੇ ਨਾ ਯੂਐਸ ਸਰਜਨ ਜਨਰਲ ਜਿਹੜੇ ਹੁੰਦੇ ਆ ਵਾਸ਼ਿੰਗਟਨ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਲਕੋਹੋਲਿਜ਼ਮ ਜਾਂ ਡਰਗ ਡਿਕਸ਼ਨ ਵਰਗੀਆਂ ਜਿਹੜੀ ਬਿਮਾਰੀਆਂ ਡਿਜ਼ੀਜ਼ ਆਫ ਬ੍ਰੇਨ ਕਹਿੰਦੇ 47000 ਲੋਕ ਜਿਹੜੇ ਆ ਹਰ ਸਾਲ ਇਨਕਿਲਰ ਵਰਗੇ ਡਰਗਸ ਨਾਲ ਮਰਦੇ ਆ ਉਹ ਕਹਿੰਦੇ ਸਾਨੂੰ ਹੁਣ ਸੋਚਣਾ ਚਾਹੀਦਾ ਇਹ ਉਹਨਾਂ ਦੀ ਲਾਈਨ ਹੈ ਕਿ ਵੀ ਸੀਡ ਵੀ ਅਪਰੋਚ ਮਤਲਬ ਵੱਖਰੀ ਵੱਖਰੀ ਨਹੀਂ ਸਾਰਾ ਕੁਝ ਹੋਲ ਨੂੰ ਵਨ ਵਨ ਕਰਕੇ ਤਾਨੂੰ ਹੋਲਿਸਟਿਕ ਅਪਰੋਚ ਚਾਹੀਦੀ ਹੈ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ, ਫੋਟੋ ਠੀਕ ਕਰਨ ਵਾਸਤੇ। ਪਰ ਬੜੀ ਸੋਹਣੀ ਗੱਲ ਕੀਤੀ ਗਿਰ ਸਾਹਿਬ ਜਿੱਦਾਂ ਤੁਸੀਂ ਹੁਣੇ ਹੀ ਕਿਹਾ ਕਿ ਬਈ એનર્ਜੀ ਤੁਸੀਂ ਘਰ ਦੀ ਠੀਕ ਕਰ ਲਈ। ਪਰ ਜੇ ਤੁਹਾਡਾ ਥੈਂਕਲੈਸ ਐਟੀਟਿਊਡ ਹੈ ਤੁਸੀਂ ਬਹੁਤ ਛੇਤੀ ਚ ਪਏ ਹੋ ਰਿਜ਼ਲਟਸ ਦੇ ਜਾਂ ਤੁਹਾਡੀ ਬੇਸਿਕ ਨੇਚਰ ਹੀ ਅਕ੍ਰਿਤ ਕਰਨ ਹੈਗੀ ਹੈ ਤੇ ਫਿਰ ਉਹਦੇ ਵਿੱਚ ਕੋਈ ਵੀ ਬੰਦਾ એનર્ਜੀ ਠੀਕ ਕਰਕੇ ਕੋਈ ਰਾਤੋਂ ਰਾਤ ਇਹ ਨਹੀਂ ਵੀ ਹੁਣ ਦੇਖੋ ਕਿਸੇ ਦੀ ਉਮਰ ਮੈਂ ਐਗਜ਼ਾਮਪਲ ਦਿੰਦਾ ਕਿਸੇ ਦੀ ਉਮਰ 70 ਸਾਲ ਤੋਂ ਉੱਪਰ ਹੁਣ ਮੈਂ ਅੰਦਰ ਜੀ ਕਰਕੇ ਆਵਾਂ ਦੀ ਵਾਈਫ ਕਹਿੰਦਾ ਆਦੀ ਮਨਣਾ ਨੇ ਮੇਰੀ ਗੱਲ ਨਹੀਂ ਮੰਨੀ ਹੁਣੇ ਮੇਰੀ ਗੱਲ ਮੰਨ ਲੈਣ ਐਕਸਪੈਕਟਿੰਗ ਟੂ ਮਚ ਜਾਂ ਕੋਈ ਕਹਵੇ ਘਰ ਚ ਭੂਤ ਪ੍ਰੇਤ ਫਿਰਦੇ ਆ ਨਾ ਇਹ ਮੰਤਰ ਵਾਲੀ ਗੱਲ ਹੈ ਨਾ ਇਹ ਮੰਤਰ ਵਾਲੀ ਗੱਲ ਹੈ ਇਹਨੂੰ ਪੜੋ ਇਹਨੂੰ ਸਮਝੋ ਹੈ ਔਰ ਬੇਸਿਕ ਘਰ ਦੀ એનર્ਜੀ ਠੀਕ ਕਰਨਾ ਇੱਕ ਅਲੱਗ ਗੱਲ ਹੈ ਉਹਨਾਂ ਬਹੁਤ ਜੀ ਨਾਲ ਫਰਕ ਪੈਂਦਾ ਆਪਣੀ એનર્ਜੀ ਠੀਕ ਕਰਨਾ ਇੱਕ ਅਲੱਗ ਗੱਲ ਹੈ اپنی એનર્ਜੀ ਠੀਕ کرنی ہے پھر साधना کرنی پاؤگی پھر سمجھنا پاؤگا لائف نو جتنا اسیں پہلے کئی پروگرام وچ کہیا سی گا کہ تھینک فل ہونا فورگیونس تے رہنا یا اقرتق گنا ہونا کیتے کسی دے کیتے نوں بھولنا نہ جانا یہ چیزاں اپنی اندر دی انرجی نوں پیورفائی کر دیتی ہے اسی طریقے نال گھر دی انرجی سی سائنٹیفکلی ٹھیک کر سکدے ہاں پر اندر دی انرجی جڑی ہے اونوں ٹھیک کرن واسطے سانو گل سمجھ نہیں پاؤگی سانو سانو ہور پیورفیکیشن دی لوڑ ہے ایک ڈاکٹر ہے گئے ہیں وہ ਉਹ ਆਪਾਂ ਪੇਸ਼ੈਂਟ ਨੂੰ ਮੈਡੀਸਿਨ ਦੇ ਦਿੰਨੇ ਆ ਜਦੋਂ ਜਦੋਂ ਕਿ ਜਦੋਂ ਕਿ ਉਹ ਮੋਲੀਕੂਲਰ ਪੋਲੈਰਿਟੀ ਡਿਸਟਰਬ ਕਰ ਦਿੰਦੀ ਆ ਮੋਲੀਕੂਲ ਜਾ ਕੇ ਕਿਉਂਕਿ ਇੱਕ ਚੀਜ਼ ਨਾਲ ਉਹਦੀ ਕੋਈ ਉਹ ਜਿਵੇਂ ਡਿਫਰੈਂਟ ਚੀਜ਼ਾਂ ਦੀ ਟੈਸਟ ਕੀਤੀ ਗਈ ਆ ਚੂਹੇ ਤੇ ਜਾਂ ਬਿੱਲੀ ਤੇ ਉਹਦੀ ਫ੍ਰੀਕੁਐਂਸੀ ਡਿਫਰੈਂਟ ਆ ਜਦੋਂ ਹਿਊਮਨ ਬੀਂਗ ਨੂੰ ਦਿੰਨੇ ਆ ਉਹਦੀ ਫ੍ਰੀਕੁਐਂਸੀ ਡਿਫਰੈਂਟ ਹੋਣ ਕਰਕੇ ਉਹ ਇੱਕ ਚੀਜ਼ ਨੂੰ ਠੀਕ ਕਰਦੀ ਦੂਜੇ ਨੂੰ ਖਰਾਬ ਕਰ ਦਿੰਦੀ ਆ ਉਹਨਾਂ ਦਾ ਕਨਕਲੂਜਨ ਕੀ ਆ ਡਾਕਟਰ ਦਾ ਉਹ ਕਹਿੰਦੇ ਆ ਉਹਨ ਆਨਲਾਈਨ ਟਾਈਮ ਦੇ ਵਿੱਚ ਕਹਿੰਦੇ ਸਾਨੂੰ ਐ ਕਰਨਾ ਪਊਗਾ ਸਾਨੂੰ ਪੇਸ਼ੀਐਂਟ ਦੀ એનર્ਜੀ ਦੇਖਣੀ ਪਏਗੀ ਮਤਲਬ ਪੇਸ਼ੀਐਂਟ ਦਾ ਆਪਣਾ ਬਾਇਓ ਕਿੰਨਾ ਹੈ। ਦੀ એનર્ਜੀ ਕਿੰਨੀ ਹੈ ਉਹ ਕਹਿੰਦੇ ਡਿਜ਼ੀਜ਼ ਜਿਹਦਾ ਕੈਂਸਰ ਡਿਪਰੈਸ਼ਨ ਕਿਸ ਫ੍ਰੀਕੁਐਂਸੀ ਤੇ ਵਾਈਬ੍ਰੇਟ ਕਰਦੇ ਆ ਆਰਥਰਾਇਟਸ ਦਾ ਕਿਸ ਤਰ੍ਹਾਂ ਦੇ ਹੈਗੇ ਆ ਫਿਰ ਜਿਹੜੀ ਮੈਡੀਸਿਨ ਦੇ ਰਹੇ ਆ ਉਹਦੀ એનર્ਜੀ ਕੀ ਆ ਪੇਸ਼ੀਐਂਟ ਦੀ એનર્ਜੀ ਉਹ ਡਿਜ਼ੀਜ਼ ਦੀ એનર્ਜੀ ਦੇ ਨਾਲ ਮਿਲਦੀ ਹੈ ਕਿ ਨਹੀਂ ਮਿਲਦੀ ਤੇ ਕੀ ਕੰਪੈਟੀਬਿਲਿਟੀ ਔਰ ਪੋਲੈਰਿਟੀ ਮੋਲੀਕੂਲਾਂ ਮਿਲਨੀ ਥੋੜੀ ਡੁੰਗੀ ਗੱਲਾਂ ਹੈ ਆਪਣਾ ਜੀ ਸਾਹਿਬ ਥੋੜੀ ਡੁੰਗੀਆਂ ਗੱਲਾਂ ਤੇ ਉਹਦੇ ਬਾਅਦ ਉਹਦੇ এনवायरमेंट ਦੀ ਕਿ ਐਨਰਜੀ ਕੀ ਇਹ ਪੰਜ ਚੀਜ਼ਾਂ ਡਾਕਟਰ ਕਹਿੰਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ এনवायरमेंट ਐਨਰਜੀ ਪੇਸ਼ੈਂਟ ਦੀ ਐਨਰਜੀ ਡਿਜ਼ੀਜ਼ ਦੀ ਐਨਰਜੀ ਮੈਡੀਸਿਨ ਦੀ ਐਨਰਜੀ ਤੇ ਉਹਦੀ ਕੰਪੈਟੀਬਿਲਿਟੀ ਕੀ ਹੈ ਉਹਦੇ ਨਾਲ ਇਹ ਪੰਜੋ ਚੀਜ਼ਾਂ ਦਾ ਜੇ ਅਸੀਂ ਰੱਖਾਂਗੇ ਖਿਆਲ ਤਾਂ ਅਸੀਂ ਹੋਲਿਸਟਿਕ ਅਪਰੋਚ ਵੱਲ ਤੁਰ ਸਕਦੇ ਹਾਂ ਤਾਂ ਤੁਹਾਨੂੰ ਆ ਨਹੀਂ ਹੋਊਗਾ ਕਿ ਬਈ ਪੇਨ ਕਲਰ ਦਿੱਤੀ ਪਰ ਬੰਦਾ ਮਾਰਦਾ ਪੇਨ ਪੇਨ ਕਲਰ ਦੀ ਇੰਨੀ ਖਾਤਰੀ ਕਿ ਪੇਨ ਪਰਮਨੈਂਟ ਹੀ ਗਾਇਬ ਹੋ ਗਈ ਨਾ ਬੰਦਾ ਰਿਹਾ ਨਾ ਕਹਿੰਦਾ ਨਾਲ ਹੈਗਾ ਬਾਸ ਨਾ ਵਜੇਗੀ ਬੰਸਰੀ ਤੇ ਉਹ ਉਹ ਤੋਂ ਆਪਾਂ ਨੂੰ ਹੌਲੀ ਹੌਲੀ ਬਾਹਰ ਆਣਾ ਪਏਗਾ ਉਹ ਕਹਿੰਦੇ ਆ ਸਾਨੂੰ ਫ੍ਰੀਕੁਐਂਸੀ ਪੋਲੈਰਿਟੀ ਜਿਓਮੈਟਰੀ ਔਰ ਕਲਰਸ ਇਹ ਹਰ ਚੀਜ਼ ਦਾ ਖਿਆਲ ਰੱਖਣਾ ਪਏਗਾ ਤੇ नेचर ਤੇ ਚੱਲੇ ਸਾਨੂੰ ਸੇਬ ਲਾਲ ਕਿਉਂ ਨਜ਼ਰ ਆਉਂਦਾ ਕਿਉਂਕਿ ਉਹ ਜਿਹੜੀ ਰੈੱਡ ਫ੍ਰੀਕੁਐਂਸੀ ਆ ਉਹਨੂੰ ਵਾਪਸ ਛੁੱਟਦਾ ਇਸ ਕਰਕੇ ਸਾਨੂੰ ਡੱਡ ਨਜ਼ਰ ਆਉਂਦਾ ਆਪਣੇ ਆਪ 'ਚ ਚੀਜ਼ਾਂ ਦਾ ਕੋਈ ਕਲਰ ਨਹੀਂ ਉਹ ਕਿਹੜੀ ਫ੍ਰੀਕਵੈਂਸੀ ਨੂੰ ਐਬਜ਼ਾਰਬ ਕਰਦੀਆਂ ਕਿਹੜੀ ਫ੍ਰੀਕਵੈਂਸੀ ਨੂੰ ਵਾਪਸ ਸੁਕਦੀਆਂ ਸਾਨੂੰ ਉਸ ਹਿਸਾਬ ਟੂ ਦੀ ਸੇਮ ਕਿ ਅਲਟੀਮੇਟਲੀ ਸਭ ਕੁਝ ਜਿੱਥੇ ਅਸੀਂ ਰਹਿ ਰਹੇ ਆ ਜੋ ਅਸੀਂ ਕਰ ਰਹੇ ਆ ਜੋ ਅਸੀਂ ਸੋਚ ਰਹੇ ਆ ਜੋ ਸਾਡਾ ਆਪਣਾ ਇਲੈਕਟ੍ਰੋਮੈਗਨੈਟਿਕ ਫੀਲਡ ਹੈ ਉਹ ਸਾਰਾ ਕੁਝ એનર્ਜੀ ਮੈਂ ਇੱਕ ਹੋਰ ਪਿੱਛੇ ਕਸੀਂ ਰਾ ਰਹੇ ਹਾਂ ਜੋਸੀਂ ਕਰ ਰਹੇ ਹਾਂ ਜੋਸੀਂ ਸੋਚ ਰਹੇ ਹਾਂ ਜੋ ਸਾਡਾ ਆਪਣਾ ਇਲੈਕਟ੍ਰੋਮੈਗਨੈਟਿਕ ਫੀਲਡ ਹੈ ਉਹ ਸਾਰਾ ਕੁਝ એનર્ਜੀ ਹੈ ਮੈਂ ਇੱਕ ਹੋਰ ਪਿੱਛੇ ਜਿਹਾ ਕਰਕੇ ਦੇਖਿਆ ਗਿਲ ਸਾਹਿਬ ਕਿ ਜਿਹੜੀ ਆਪਾਂ ਚਿਪ ਦੀ ਗੱਲ ਕੀਤੀ ਸੀ ਮੈਂ ਕੀ ਚਿਪ ਬੰਦੇ ਦਾ ਇਲੈਕਟ੍ਰੋਮੈਗਨੈਟਿਕ ਫੀਲਡ ਕੇ ਜਦੋਂ ਪੜਿਆ ਉਦੋਂ ਉਹ ਵੀ ਚੈਕ ਟ੍ਰੀਮੈਂਟ ਕਰਕੇ ਦੇਖਿਆ ਗਿਲ ਸਾਹਿਬ ਕਿ ਜਿਹੜੀ ਆਪਾਂ ਫੋਨ ਚਿਪ ਦੀ ਗੱਲ ਕੀਤੀ ਸੀ ਮੈਂ ਕੀ ਕੀਤਾ ਮੈਂ ਫੋਨ ਚਿਪ ਬੰਦੇ ਦਾ ਇਲੈਕਟ੍ਰੋਮੈਗਨੇਟਿਕ ਕੋਈ ਲਾਪ ਕੇ ਜਦੋਂ ਨੇ ਸੈੱਲ ਉਦੋਂ ਜਦੋਂ ਫਿਰ ਮੈਂ ਜਿਹੜੀ ਆਪਣੀ ਚਿਪ ਬਣਾਈ ਹੈ ਮੈਂ ਮੇਰੀ ਚਿਪ ਉਹਨਾਂ ਨੇ ਉਹ ਐਕਸਪੈਰੀਮੈਂਟ ਕਰਕੇ ਦੇਖਿਆ ਉਹ ਚਿਪ ਲਗਾ ਕੇ ਕਿ ਦੁਆਰਾ ਬੰਦੇ ਦਾ એનર્ਜੀ ਫੀਲਡ ਲੱਗ ਪਿਆ ਜਦੋਂ ਚਿਪ ਲੱਗਦੀ ਹੈ ਉਦੋਂ એનર્ਜੀ ਫੀਲਡ ਉਹਦਾ ਵਧਿਆ ਹੋਇਆ ਸੀਗਾ ਆ ਰਹੀ ਹੈ ਵਾਈਟ 셀 ਕੰਟੀਨਿਊਸਲੀ ਫਾਈਟ ਕਰ ਰਿਹਾ ਹੈ ਹੌਲੀ ਹੌਲੀ ਜਿਹੜੀ ਹੈ ਉਹ ਬਾਡੀ ਬਾਡੀ ਗਿਵ ਅਪ ਕਰਨਾ ਸ਼ੁਰੂ ਕਰ ਦੇਗੀ ਸੋ ਅਸੀਂ ਜਦੋਂ ਸੁੱਤੇ ਹੁੰਨੇ ਆ ਉਸ ਟਾਈਮ ਸਾਡੇ ਕੋਈ 500 ਮਿਲੀਅਨ ਜਿਹੜੇ ਸੈਲਸ ਹੈਗੇ ਉਹਨਾਂ ਵਿੱਚ ਨਵੇਂ ਸੈਲਸ ਦੀ ਫਾਰਮੇਸ਼ਨ ਹੁੰਦੀ ਹੈ ਔਰ ਪੀਨਿਅਰ ਗਲੈਂਡ ਇੰਨਾਕ ਉਹ ਹੈਗਾ ਸੈਂਸਿਟਿਵ ਕਿ ਜੇ ਹਾਈ ਫ੍ਰੀਕੁਐਂਸੀ ਰੇਡੀਏਸ਼ਨ ਆ ਰਹੀਆਂ ਉਹਨੂੰ ਛੱਡ ਕੇ ਸਾਡੀ ਸਾਰੀ એનર્ਜੀ ਉਧਰ ਫਾਈਟ ਕਰਨਾ ਸ਼ੁਰੂ ਕਰ ਦਿੰਦਾ ਡਿਫਰੈਂਟ ਆ ਪਰ ਕੱਟੇ ਵੀ ਜਗਾ ਜਗਾ ਦੇ ਉੱਪਰ ਇਹ ਸੰਚਲਨ ਰਹੀ ਹੈ different way of thinking ਹੈ ਅੱਜ ਨਹੀਂ ਅੱਜ ਤੋਂ ਤੁਸੀਂ 20 ਸਾਲ ਬਾਅਦ ਦੇਖਿਓ ਹਾਊ ਮੈਨੀ ਪੀਪਲ ਵਿਲ ਬੀ ਅਟਰੈਕਟਡ ਟੁਵਾਰਡਸ ਥਿਸ ਕਿਉਂਕਿ ਇਹ ਇਹਨਾਂ ਚੀਜ਼ਾਂ ਨੂੰ ਕੋਈ ਫੰਡਿੰਗ ਨਹੀਂ ਹੁੰਦੀ ਇਹ ਲੋਕ ਉਹ ਆ ਜਿਹੜਾ ਕੋਈ ਸ਼ੌਕ ਨਾਲ ਕਰਦੇ ਤੇ ਜਿਹੜਾ ਫਰਦਰ ਮਤਲਬ ਕੁਝ ਕਰ ਤੁਸੀਂ ਘਰ ਦੇ انرਜੀ ਚੈੱਕ ਕਰਦੇ ਹੋ ਉਹਦੀ ਕਰੇਡੀਬਿਲਟੀ ਕੀ ਹੈ ਜਿਹੜਾ ਜੰਤਰ ਨਾਲ ਚੈੱਕ ਕਰਦੇ ਹੋ ਉਹ ਜੰਤਰ ਕੀ ਹੈ ਜਿੱਥੋਂ ਪਤਾ ਲੱਗੇ ਤੁਹਾਨੂੰ ਔਰ ਕਿਹ ਜਿਹੇ ਆਲਮਤਾ ਮਿਲਦੇ ਤੁਸੀਂ ਨਿਰਜੀ ਤੌਰ ਤੇ ਮਹਿਸੂਸ ਕਰਦੇ ਹੋ ਕਿ ਜੈ ਇਨਸਟਰੂਮੈਂਟ ਦੱਸਦਾ ਵੀ ਇੱਥੇ એનર્ਜੀ ਮਾੜੀ ਮੈਂ ਮੈਂ ਆਪਣੇ ਆਪ ਵਿੱਚ ਨਹੀਂ ਲੈਂਦਾ ਜੀ ਮੈਂ ਤਾਂ ਇਨਸਟਰੂਮੈਂਟ ਜਦੋਂ ਘੜ ਦੀ એનર્ਜੀ ਚੈੱਕ ਕਰਨੀ ਹੈ ਉਦੋਂ ਮੈਂ ਇਨਸਟਰੂਮੈਂਟ ਦੇ ਹਿਸਾਬ ਨਾਲ ਹੀ ਚੱਲਦਾ ਹੈਗਾ ਆਈ ਐਮ ਨੋਵੇਅਰ ਇਨ ਬਿਟਵੀਨ ਮੋਲੀਕੂਲਰ ਰੈਜ਼ੋਨੈਂਸ ਤੇ ਬੇਸਡ ਹੁੰਦਾ ਜਸਕੈਨ ਸੈਂਸ ਕਰਦਾ ਤਾਂ ਆਪਾਂ ਉਸ ਹਿਸਾਬ ਨਾਲ ਹੀ ਚੈੱਕ ਕਰੀਦੀ ਆਈ ਸਟੈਂਡ ਆਈ ਐਮ ਨੋਟ ਇਨ ਬਿਟਵੀਨ ਥੇ ਉਹ ਮੇਰੀ ਮੇਰੀ ਕੋਈ ਕੋਈ ਐਸਟ੍ਰੋਲੋਜੀ ਨਹੀਂ ਹੈ ਕੋਈ ਉਹ ਚੀਜ਼ ਨਹੀਂ ਹੈ ਕਿ ਮੈਂ ਇਹ ਕਹਾਂ ਕਿ ਵੀ ਭਈ ਚੰਦ ਤਾਰੇ ਤੁਹਾਡੇ ਦੁਦਰ ਹਿੱਲੇ ਹੋਏ ਆ ਸਮਥਿੰਗ ਲਾਈਕ ਥੈਟ ਹਾਲਾਂਕਿ ਮੈਂ ਐਸਟ੍ਰੋਲੋਜੀ ਦੀ ਵੀ ਰਿਸਪੈਕਟ ਕਰਦਾ ਕਿਉਂਕਿ ਮੈਨੂੰ ਨੋਲੇਜ ਨਹੀਂ ਹੈਗੀ ਉਸ ਚੀਜ਼ ਦੀ ਥੈਟ ਇਜ਼ ਅਨਦਰ ਸਟੋਰੀ ਬਸ ਮੈਂ ਕਹਿੰਦਾ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਊਗਾ ਚੀਜ਼ ਬਣੀ ਹੈ ਕਿਸੇ ਨੇ ਡੀਪ ਡਾਉਨ ਕਦੇ ਸਟੱਡੀ ਕੀਤੀ ਹੋਊਗੀ ਹੌਲੀ ਹੌਲੀ ਉਹਦੇ ਵਿੱਚ ਆਂਦੇ ਆਂਦੇ ਆਂਦੇ ਆਂਦੇ ਕਮੀਆਂ ਪੇਸ਼ੀਆਂ ਆ ਗਈਆਂ ਸੋ ਆਈ ਡੋਨਟ ਚੈਲੰਜ ਐਨੀਬਾਡੀ ਪਰ ਉਹ ਮੇਰਾ ਫੀਲਡ ਨਹੀਂ ਹੈ ਉਹ ਮੈਂ ਮੈਂ ਜਿਸ ਤੱਕ ਮੇਰਾ ਤਾਂ ਕੰਮ ਦਾ ਪਿਓਰਲੀ ਇਨਸਟਰੂਮੈਂਟ ਬੀਸਟ ਐਂਡ ਪਿਓਰਲੀ ਸਾਇੰਟਿਫਿਕ ਵੇ ਆਫ ਡੂਇੰਗ ਇਟ ਔਰ ਜਿਹੜੀ ਕਰੈਕਸ਼ਨ ਕਰਨੀ ਹੈ ਉਹ ਵੀ ਉਸੇ ਤਰ੍ਹਾਂ ਦਿਖਾਣੀ ਹੈ ਮੈਂ ਇਹ ਕਹਦਾ ਵੀ ਕਰੈਕਸ਼ਨ ਦਾ ਇਮੀਡੀਏਟਲੀ ਮਤਲਬ ਹੁੰਦੇ ਇਹ ਨਹੀਂ ਹੁੰਦਾ ਕਿ ਮੇਰਾ ਫਾਰਮੂਲਾ ਐਨਰਜੀ ਮਾਸ ਟੂ ਇਜ਼ ਇਕੁਅਲ ਟੂ ਐਨ ਮੈਂ ਸਿਰਫ ਐਨਰਜੀ ਨੇਚਰਲ ਕਰਨੀ ਔਰ ਸਵਰੇਬਲ ਹੋਣੀ ਚਾਹੀਦੀ ਹੈ ਜੇ ਐਨਰਜੀ ਤੁਹਾਡੇ ਅਗੇਂਸਟ ਹੈ ਜਿੱਦਾਂ ਮੈਂ ਮੇਰੇ ਖਾਲ ਤੁਹਾਡੇ ਪ੍ਰੋਗਰਾਮ ਚ ਵੀ ਇਹ ਹੀ ਐਗਜ਼ਾਮਪਲ ਦਿੱਤਾਉਣਾ ਕਿ ਜਾਜ ਉੜਿਆ ਜਾ ਰਿਹਾ ਤੇ ਪਿੱਛੋਂ ਹਵਾ ਆ ਰਹੀ ਹੈ ਤੇਲ ਵਿੰਡਾ ਛੇਤੀ ਪਹੁੰਚ ਜਾਊਗਾ ਅੱਗੋਂ ਆ ਰਹੀ ਹੈ ਤਾਂ ਉਹੀ ਟਾਈਮ ਜ਼ਿਆਦਾ ਲੱਗੂਗਾ ਮੈਂ ਸਿਰਫ ਐਨਰਜੀ ਫੇਵਰੇਬਲ ਕਰ ਰਿਹਾ ਐਨਰਜੀ ਨੋਰਮਲ ਕਰ ਰਿਹਾ ਤਾਂ ਕਿ ਜਦੋਂ ਤੁਸੀਂ ਐਕਚੁਅਲੀ ਬਾਡੀ ਤੁਹਾਡੀ ਰਿਲੈਕਸ ਕਰੀ ਤੋਂ ਜਿਹੜੇ ਬੈਠੇ ਹੋ ਰਿਲੈਕਸ ਬੈਠੇ ਹੋ ਉਹ ਕਿ ਤੁਹਾਡੇ ਵਾਈਟ ਸੈੱਲ ਜਿਹੜੇ ਨਾਲ ਫਾਇਟ ਕਰ ਤੁਮ ਦੈਟ ਇਜ਼ ਵਾਟ ਆਮ ਇਹੀ ਮੇਰੀ ਕੁਝ ਇਹਦੇ ਚ ਇਹੀ ਜੇ ਕੋਈ ਮੈਡੀਟੇਸ਼ਨ ਕਰਦਾ ਹੈ ਜਾਂ ਕੁਝ ਕਰਦਾ ਮੈਂ ਨਹੀਂ ਕਹਿੰਦਾ ਕੋਈ ਮੈਰਕਲ ਹੁੰਦਾ ਹੈ ਮੇਰੇ ਕੋਲ ਤਾਂ ਦੁਨੀਆ ਬਣਾ ਲੈਂਦੀ ਹੈ ਸਿਸਟਮ ਜਿਹੜੇ ਹਨ ਹਰ ਚੀਜ਼ ਬਹੁਤ ਵੱਡੇ ਵਿਚਾਰਕ ਹੋਏ ਹਨ ਅਰਬਿੰਦੂ ਗੋਖਸ ਉਹਨਾਂ ਨੇ ਕਿਹਾ ਕਿ ਬਈ ਕੋਈ ਮੈਰਕਲ ਨਹੀਂ ਦੁਨੀਆ ਚ ਹੁੰਦਾ ਜਿਹੜਾ ਤੁਹਾਨੂੰ ਮੈਰਕਲ ਲੱਗਦਾ ਉਹ that is sad part of the knowledge which is not known to you ਤੁਹਾਨੂੰ ਜਿਸ ਗਿਆਨ ਨਹੀਂ ਹੈ ਉਹ ਤੁਹਾਨੂੰ ਮੈਰਕਲ ਲੱਗਦਾ ਕਿ ਸਿਸਟਮ ਨਾਲ ਹੋ ਰਹੀ ਪਰ ਜਦੋਂ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਹਿ ਦਿੰਨੇ ਕੋਇਨਸੀਡੈਂਸ ਹੋ ਗਿਆ ਹੋ ਗਿਆ ਉਹ ਹੋ ਗਿਆ ਕਿ ਸਾਰੀਆਂ ਸਿਸਟਮ ਨਾਲ ਹੀ ਹੁੰਦੀਆਂ ਤਮਾਤਮਾ ਜਾਂ ਐਗਜ਼ਿਸਟੈਂਸ ਜਿਹਨੂੰ ਕਹਾਲੋ ਜਾਂ ਯੂਨੀਵਰਸਲ એનર્ਜੀ ਕਹਾਲੋ ਜਾਂ ਉਹ એનર્ਜੀ ਜਿਹਦਾ ਰੰਗ ਰੂਪ ਕੋਈ ਨਹੀਂ ਹੈਗਾ ਉਹਨੂੰ ਕਹਾਲੋ ਉਹਦੇ ਕੋਲ ਕੁਝ ਹੋਰ ਹੋਵੇ ਨਾ ਹੋਵੇ ਉਹਦੇ ਕੋਲ ਇੰਟੈਲੀਜੈਂਸ ਪੂਰੀ ਹੈਗੀ ਇਸੇ ਕਰਕੇ ਜਿਹੜਾ ਲਾਫ ਸਿਕਰਟ ਵੀ ਮੈਂ ਪਹਿਲੇ ਗੱਲ ਕਰ ਚੁੱਕਾ ਵੀ ਜਿਹੜਾ ਲਾਫ ਐਕਸ਼ਨ ਦੀ ਬਾਰ ਬਾਰ ਅਸੀਂ ਕਰਦੇ ਆ ਮੈਂ ਕਹਿੰਦਾ ਵੀ ਆਪਣੀ એનર્ਜੀ ਠੀਕ ਕਰਨੀ ਹੈ ਹਰਕੇ ਦੇ ਕੁਝ ਦਿਨ ਬੀ ਥੈਂਕਫੁਲ ਰਿਮੇਨ ਇਨ ਗ੍ਰੈਟੀਟਿਊਡ ਕਿਸੇ ਦਾ ਕੀਤਾ ਭੁੱਲੋ ਨਾ ਔਰ 10-15 ਮਿੰਟ ਆਪਣੇ ਆਪ ਨਾਲ ਇਕੱਲੇ ਬਹਿ ਕੇ ਦੇਖੋ ਮੇਰੇ ਅੰਦਰ ਕੀ ਚੱਲ ਰਿਹਾ ਥੋੜਾ ਟਾਈਮ ਦੇਖੋ ਤਾਂ ਸਹੀ ਧਿਆਈ ਤਾਂ ਕਰੋ ਕਿ ਹਰ ਚੀਜ਼ਾਂ ਸਭ ਸਹੀਲੀ ਵਰਕ ਮੇਰੀ એનર્ਜੀ ਹੋਏ ਚਾਹੇ ਉਹ ਕਾਦੀ એનર્ਜੀ ਤੇ ਥੋੜਾ ਵਰਕ ਬਸ ਕੱਲ ਸਮਝ ਨਹੀਂ ਪਈ ਅਖੀਰ ਦੇ ਵਿੱਚ ਆਪਣਾ ਨੰਬਰ ਛੱਡ ਕੇ ਜਾਓ ਜੀ ਤੇ ਜਿਨ੍ਹਾਂ ਨੇ ਵੀ ਚਾਹਿਆ ਉਹ ਤੁਹਾਨੂੰ ਫੋਨ ਕਰਨਗੇ ਫਿਰ ਵਨ ਟੂ ਤੁਸੀਂ ਮਿਲ ਸਕੋ ਫੋਨ ਵਰਕ ਕੀ ਹੈ 604 7211004 ਮੇਰਾ ਨੰਬਰ ਹੈ ਜੀ 604 721 3004 ਮੈਂ ਜਰਫਲੋ ਬੋਲ ਦਵਾਂ 604 604 721 701 1004 1004 ਔਰ elisiaenergy.com ਮੇਰੀ ਵੈਬਸਾਈਟ ਹੈ e, e like elephant l y s i a elisiaenergy e LNC @ivy.nargis.com ਤੇ ਤੁਸੀਂ ਅਗਰ ਫੋਨ ਚ ਵਗੈਰਾ ਲੈਣੀ ਹੋਵੇ ਤੁਸੀਂ ਆਨਲਾਈਨ ਜਾ ਕੇ ਵੀ ਆਰਡਰ ਕਰ ਸਕਦੇ ਹੋ ਮੈਨੂੰ ਫੋਨ ਕਰਨਾ ਹੋਵੇ ਤੇ ਮੋਰ ਦਨ ਵੈਲਕਮ ਐਨੀ ਟਾਈਮਸ ਫॉर ਐਨੀ ਕੁਐਸਚਨ 6047211004721104 ਥੈਂਕ ਯੂ ਸਰ ਧੰਨਵਾਦ ਜੀ ਥੈਂਕ ਯੂ ਸੋ ਮਚ ਵਪਾਰਕ ਸੰਦੇਸ਼ ਤੇ ਉਸ ਤੋਂ ਬਾਅਦ ਬਾਤਾਂ ਹੋਣ named to 15:50 a.m. KRPI Ferndale the views expressed are not necessarily those of the staff management or ownership of this station 12:00 baje ji Punjab de vich votaan lokaan di ਜਿਹੜੀ ਰਾਜਨੀਤਿਕ ਬੰਦਿਆਂ ਦੀ ਕਿਸਮਤ ਹੈ ਉਹ ਵਰਦਪਈਏ ਜਿਹੜੀਆਂ ਮਸ਼ੀਨਾਂ ਨੇ ਈਵੀਐਮ ਉਹਨੂੰ ਕਹਦੇ ਨੇ ਉਧਰ ਤੋਂ ਅਨੈਲੋ ਵਾਲੇ ਪੰਜਾਬ ਚ ਬਣਨ ਨੂੰ ਫਿਰਨ ਪੀਰ ਮੁਹੰਮਦ ਮੂਰੀਓ ਕਹਿੰਦਾ ਤੇ ਪੁਲਿਸ ਮੂਰੀਓ ਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਉਧਰ ਨੂੰ ਜਾਣਾ ਅਸੀਂ ਤਾਂ ਠਿਕਰੀ ਪੈਰਾ ਈਵੀਐਮ ਤੇ ਦੇਣਾ ਜਿੱਥੇ ਇਲੈਕਟ੍ਰੋਨਿਕ VOTING ਮਸ਼ੀਨਾਂ ਪਈਆਂ ਅਸੀਂ ਉਧਰ ਨੂੰ ਵੀ ਜਾਣਾ ਕਿਤੇ ਉਧਰ ਨੂੰ ਤੋਰ ਕੇ ਇਥੇ ਮਸ਼ੀਨਾਂ ਹੀ ਲੈ ਜਾਏ ਕੋ ਚੱਕ ਕੇ ਉਹ ਜਾਈ ਇੱਕ EVM ਤੇ ਆਉਣ ਵਾਲੇ ਸਮੇਂ ਤੇ ਇੱਕ ਗੀਤ ਆ ਗਰਨਾਮ ਭੁੱਲਦਾ ਸੁਣੋ ਬਰਾਬਰ ਜਿਕੇ 4 ਮਿੰਟ ਹੋਏ ਨੇ ਹਲੇ ਤਾਂ ਹਾਸਾ ਦਿਖਦਾ ਹੈ ਮਾਰਚ ਤੋਂ ਬਾਅਦ ਪਤਾ ਨਹੀਂ ਕੀ ਦਾ ਕੀ ਦਾ ਸਰਾਈਆਂ ਬਹੁਤ ਲੱਗ ਰਹੀਆਂ ਪਰ ਠੰਡੇ ਮਤ ਨਾ ਰਹੋ ਵਕਤੋਂ ਪਹਿਲਾਂ ਪਾਣੀ ਤੋਂ ਪਹਿਲਾਂ ਮੌਜੇ ਨਾਲ ਲਾ ਲਿਓ ਕਈ ਵਾਰ ਜਿਤਨੇ ਜਿਤਨੀਆਂ ਫੌਜਾਂ ਤੋਂ ਹਾਰ ਜ਼ਿੰਮੇ ਤੇ ਰੋ ਬੈਠ ਕੇ ਤਮਾਸ਼ਾ ਦੇਖੋ ਇੱਜ਼ੀ ਰਹਿ ਕੇ ਕਿ ਕਿਤ ਕਿਜ਼ੀ ਇੱਕ ਸ਼ੋਕਮਈ ਸੂਚਨਾ ਦੇ ਦਿਆਂ ਮੈਂ ਸੋਗਮਈ ਸੂਚਨਾ ਦੇ ਦਿਆਂ ਕਿ ਮਾਤਾ ਜੀ ਗੁਰਦੇਵ ਕੌਰ ਗਿੱਲ ਸੁਪਤਨੀ ਸਰਦ ਜ਼ੋਰਾਵਰ ਸਿੰਘ ਗਿੱਲ ਪਿੰਡ ਕੋਕਰੀ ਫੂਲਾ ਸਿੰਘ ਤਹਿਸੀਲ ਤੇ ਜ਼ਿਲ੍ਹਾ ਮੋਗਾ ਸਰੀਚ ਰਹਿੰਦੇ ਸੀ 17 ਫਰਵਰੀ 97 ਸਾਲ ਦੀ ਉਮਰ ਪੂਕ ਕੇ ਅਕਾਲ ਚਲਾਣਾ ਕਰ ਗਏ ਅੰਤਮ ਸੰਸਕਾਰ 26 ਨੂੰ ਦੁਪਹਿਰ 2 ਵਜੇ ਫਾਈਵ ਰਿਵਰ ਫਿਊਨਰਲ ਹਾਲ ਦੇ ਵਿੱਚ ਹੋਣਾ ਉਹਦੇ ਬਾਅਦ ਦੁੱਖ ਨਿਵਾਦ ਗੁਰਦੁਆਰਾ ਸਾਹਿਬ 151 ਤੇ ਠਾਠ ਦੇ ਵਿੱਚ ਅੰਤਮ ਅਰਦਾਸ ਹੋਣੀ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਰ ਜੋਰਾਬਰ ਸਿੰਘ ਗਿੱਲ 7785786174 ਤੇ ਬੇਟਾ ਦਲਜੀਤ ਸਿੰਘ ਗਿੱਲ 66476421 70 ਪੰਜਾਬ ਬੈਂਕ ਹਾਲ ਪ੍ਰੋਗਰਾਮ ਦੇ ਸਪான்ਸਰ ਸ਼ੇਸ਼ੂਚਰ 5987611 ਸ਼ਾਮਾ ਗਿੱਲ ਦਾ ਇਹ ਨੰਬਰ ਹੈ ਪਾਰਟੀ ਕੋਈ ਕਰਨੀ ਕਿਸੇ ਕਿਸਮ ਦੀ ਵਧੀਆ ਪਾਰਟੀ ਹੈ ਜਿਹੜੀ ਉਹ ਪੰਜਾਬ ਬੈਂਕ ਹਾਲ ਚ ਕੀਤੀ ਜਾਂਦੀ ਹੈ ਸੇਵਾ ਪੂਰੀ ਬੈਂਕ ਕਟ ਹਾਲ ਪੂਰਾ ਸਜਾਇਆ ਹੋਇਆ ਹੈ ਕਰਕੇ ਹਟੇ ਹੈ ਸਾਰਾ ਫਰਨੀਚਰ ਸਾਊਂਡ ਸਿਸਟਮ ਦਾ ਫਲੋਰ ਸਾਰਾ ਕੁਝ ਵਧੀਆ ਇੱਕ ਸਮੇ ਇਕੋ ਹੀ ਪਾਰਟੀ 604 598 7611 ਪਰਮਿੰਦਰ ਸਿੰਘ 604 828 7213 thinkinginsurance.ca ਅਲਬਰਟਾ ਦੇ ਵਿੱਚ ਤੇ BC ਦੇ ਵਿੱਚ ਸੇਵਾਵਾਂ ਦਿੰਦੇ ਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਮਾਰਗਰ ਸੁਪਰ ਦੀ ਇੰਸ਼ੋਰੈਂਸ ਤੇ ਨਾਲ ਡਿਸੇਬਿਲਟੀ ਜੇ ਸੱਟ ਪੇਟ ਲੱਗ ਜੇ ਬਰਫ਼ ਚੋਂ ਤਿਲਕੇ ਤਾਂ ਵੀ ਆਰ ਐਸ ਪੀ, ਈ ਐਸ ਏ, ਆਰ ਐਸ ਪੀ। ਕਿਉਂ ਲੱਗਦਾ ਜਿਵੇਂ ਕਿਸੇ ਐਮ ਬੀਬੀਐਸ ਦੇ ਨਾਲ ਐ ਡਿਗਰੀਆਂ ਲਿਖੀਆਂ ਹੁਣ। ਆਰ ਐਮ ਦੇ ਜਿਹੜੇ ਹੁੰਦਾ ਸੀ, ਉਹਦੇ ਨਾਲ ਆਲੇ ਬੜੀ ਗੱਲ ਬਣਦੀ ਸੀ ਆਰ ਐਮ ਪੀ। ਪੈਰਾਸੈਟਾਮੋਲ, ਕੋਕੀਨ ਜਿਹੜੀਆਂ ਕਨੀਹਂ ਦੀਆਂ ਗੋਲੀਆਂ ਸੱਚ। ਦੋ ਖਾ ਲਿਓ ਦੁੱਧ ਨਾਲ, ਰਜਾਈ ਲੈ ਲਿਓ ਤੇ ਜਦ ਪੂਰਾ ਮੁੜਕਾ ਜੇ ਏਰ ਯਾਇਲੀਆਂ ਉੱਪਰ ਜੇ ਕਿਤੇ ਮੁੜ ਕੇ ਚ ਹਵਾ ਲੱਗੀ ਅੰਗ ਪੈਰ ਖੜ ਸਕਦਾ ਖਿਆਲ ਰੱਖਿਓ ਅੰਦਰ ਪੇਟੀਆਂ ਵਾਲੇ ਮੰਝਾ ਢਾਹ ਲਿਓ ਇਹ ਬਸ ਅੰਦਰ ਹੀ ਰੱਖਦੇ ਹੀ ਬੰਦੇ ਇੱਥੇ ਉਲਟ ਕੰਮ ਜਿੱਥੇ ਸੁੱਚੀਆਂ ਪੁੱਠੀਆਂ ਜਗਦੀਆਂ ਇੱਥੇ ਕਹਿੰਦੇ ਜੇ ਬੰਦੇ ਨੂੰ ਬੁਖਾਰ ਹੋ ਗਿਆ ਉਹਨੂੰ ਕਹਿਵੇ ਚੱਲ ਬਈ ਜਕੂਜੀ ਭਰ ਉਹ ਤਾਂ ਭਰਨੀ ਨਹੀਂ ਜਕੂਜੀ ਭਰ ਕੇ ਉਹ ਚ ਬਹਿ ਜਾ ਬੁਖਾਰ ਠੀਕ ਹੋ ਜਾ ਸਿਆਣੇ ਡਾਕਟਰ ਨੇ ਉਹ ਕਹਿੰਦੇ ਜੇ ਬੁਖਾਰ ਛੱਡਦਾ ਬੋਡੀ ਆ ਜਿਹੜੀ ਬੈਕਟੀਰੀਆ ਨਾਲ ਲੜ ਰਹੀ ਹੁੰਦੀ ਹੈ ਤੇ ਬੁਖਾਰ ਚੜਨਾ ਚਾਹੀਦਾ। ਬੰਦੇ ਦੀ ਜਹਿ ਜਾਂਦੀ ਹੋ ਜਾਂਦੀ ਹੈ ਤੇ ਉਹਦੇ ਬਾਅਦ ਫੇਰ ਵੀ ਹਲੇ ਕਹਿੰਦੇ। ਸੋ ਇਹ ਜਿਹੜੀ ਪਰਮਿੰਦਰ ਸਿੰਘ 604 828 7213 ਥਿੰਕ ਇੰਸ਼ੋਰੈਂਸ.ਸੀਏ ਕਿਉਜੀ ਇੰਸ਼ੋਰੈਂਸ ਤੁਸੀਂ ਕਰਾਉਣੀ ਹੈ ਤਾਂ 6048287213 ਤੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਰਮਨਦੀਪ ਸਿੰਘ ਸੋਹਤ ਅਲਬਰਟਾ ਦੇ ਵਿੱਚ ਨੇ ਤੇ ਇੱਥੇ ਪ੍ਰਮਿੰਦਰ ਸੈਨ। OS S Windows 6975033@osswindows.com ਤੇ ਤੁਸੀਂ Windows ਬਾਰੇ ਤੇ ਇਹਨਾਂ ਦੇ ਪ੍ਰੋਡਕਟਸ ਬਾਰੇ ਤੇ ਸੇਲਸ ਟੀਮ ਬਾਰੇ ਪਤਾ ਕਰ ਸਕਦੇ ਹੋ 5975033 ਨੰਬਰ ਸਹੀ ਚ ਬਣਦੀ ਹੈ ਨਾਂ ਥੱਲੇ ਤੇ ਉਹ ਆ OS S Windows। ਵਿੰਡੋਉਂਡੈਸਟੀ ਵੱਡਾ ਨਾ ਮੈਂ ਸ਼ੁਰੂ ਚ ਇੰਡਸਟਰੀ ਸ਼ੁਰੂ ਕੀਤੀ। ਮਲਟੀ ਫੈਮਿਲੀ ਟਾਊਨ ਹਾਊਸ ਕਾਂਡੋ ਜਿੱਡੇ ਵੀ ਵੱਡੇ ਪ੍ਰੋਜੈਕਟ ਵੱਡੇ ਘਰ ਬਣਦੇ ਆ ਤੇ ਤੁਸੀਂ ਉਹ ਇਸ ਵਿੰਡੋਜ਼ ਦੀਆਂ ਵਿੰਡੋਜ਼ ਵੇਖਦੇ ਹੋ ਬੜਾ ਨਾਮਣਾ ਖੱਟਿਆ 6045975033 ਬਾਰਖ ਸੁਨੀਸ਼ ਵਾਪਸ ਹੁਣ ਇੱਕ ਬਹੁਤ ਹੀ ਉੱਦਮ ਹਰ ਸਾਲ ਸਾਡੀ ਇੱਥੇ ਪਨੀਰੀ ਲਈ ਸਾਡੇ ਬੱਚਿਆਂ ਲਈ ਸਿਕਸ ਸੁਸਾਇਟੀ ਆਫ ਵੈਨਕੂਵਰ ਵੱਲੋਂ ਤੇ ਗੁਰਦੁਆਰਾ ਦੁੱਖ ਨਿਵਾਰਨ ਵੱਲੋਂ ਰਲ ਕੇ ਕੀਤਾ ਜਾਂਦਾ ਭਾਈ ਗੁਰਦਾਮ ਸਾਨੂੰ ਗੁਮਤ ਸੰਗੀਤ ਸਮਾਗਮ ਬੱਚਿਆਂ ਦੇ ਕੀਰਤਨ ਮੁਕਾਬਲੇ ਹੁੰਦੇ ਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਤਾਂ ਪਰਫਾਰਮੈਂਸ ਜਿਹੜੀ ਉਹ ਗੁਰੂ ਦੀ ਬਾਣੀ ਸਰਵਣ ਕਰਦੇ ਆ ਤੇ ਕੀਰਤਨ ਰਾਗਾਂ ਦੇ ਵਿੱਚ ਉਹ ਕਰਾਉਂਦੇ ਆ ਸੰਗਤ ਖੁਸ਼ ਹੁੰਦੀ ਆ ਤੇ ਉੱਥੇ ਬੱਚਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਬਹੁਤ ਵਧੀਆ ਉਹਨਾਂ ਨੂੰ ਸਨਮਾਨਿਤ ਤੇ ਬਹੁਤ ਵਧੀਆ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਆ ਸਰਗ ਲਾਲ ਸਿੰਘ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਨੇ ਉਹ ਮੇਰੇ ਨਾਲ ਨੇ ਉਹ ਇਸ ਸਮੇਲਨ ਬਾਰੇ ਦੱਸਣਗੇ ਜਿਹੜਾ ਕੱਲ ਨੂੰ ਹੋ ਰਿਹਾ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 9:30 ਵਜੇ ਤੋਂ ਚਾਰ ਵਜੇ ਤੱਕ ਸ੍ਰੀ ਗੁਰਲਾਲ ਸਿੰਘ ਜੀ ਤੁਹਾਡਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਜੀ ਇਸ ਸਮੇਲਨ ਬਾਰੇ ਦੱਸੋ ਵੀਰ ਜੀ ਹਾਂ ਵੀਰ ਜੀ ਇਹ ਇਸ ਸਮਾਗਮ ਹੈਗਾ ਜੀ ਸਾਰੇ ਵੀਰਾਂ ਭੈਣਾਂ ਨੇ ਰਲ ਕੇ ਇੱਥੇ ਜੋ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਕਿ ਬੱਚੇ ਕੀਰਤਨ ਤੇ ਕਰਦੇ ਨੇ ਉਹਨਾਂ ਨੂੰ ਉਪਸ਼ਾਦ ਕੋਈ ਵੀ ਜੱਥੇਬੰਦੀ ਨਹੀਂ ਕਰਦੀ। ਉਦੋਂ ਲੈ ਕੇ ਹੁਣ ਤੱਕ ਇਹ ਸਲਾਨਾ ਪ੍ਰੋਗਰਾਮ ਚੱਲ ਰਿਹਾ। ਅਗਲੇ ਸਾਲ ਤੋਂ ਇਸੇ ਪ੍ਰੋਗਰਾਮ ਨੂੰ ਅਸੀਂ ਅਲਵਾਰਟਾ ਅਤੇ ਕੈਲੀਫੋਰਨੀਆ ਤੱਕ ਸਾਰੇ ਬੱਚਿਆਂ ਨੂੰ ਵਿੱਚ ਇਨਵੋਲਵ ਕਰਾਂਗੇ। ਇਸ ਸਾਲ ਅਜੇ ਲੋਰਨੇਲੈਂਡ ਤੱਕ ਸੀਮਤ ਹੈਗਾ। ਕਿ ਕੱਲ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮੀ 4 ਵਜੇ ਤੱਕ ਚੱਲਣਾ ਜੀ ਜਿਹਦੇ ਵਿੱਚ ਪੈਟਰਨ ਇਹ ਬਣਾਇਆ ਗਿਆ ਸੀ ਕਿ ਬੱਚੇ ਆਪਣੀ ਵੀਡੀਓ ਜਿਹੜੇ ਰਾਗਾਂ ਤੇ ਅਧਾਰਿਤ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਗਈਆਂ ਉਹਨਾਂ ਦੇ ਅਕੋਰਡਿੰਗ ਆਪਣੇ ਜਿਹੜੇ ਸ਼ਬਦ ਆ ਰਿਕਾਰਡ ਕਰਕੇ ਸਾਨੂੰ ਭੇਜਣਗੇ ਜੱਜ ਸਰਵਾਂ ਜੱਜ ਕਰਕੇ ਪਹਿਲੀਆਂ 17 ਟੀਮਾਂ ਉਹਨਾਂ ਨੇ ਜਿਹੜੀਆਂ ਵੀ ਕੱਢੀਆਂ ਉਹ ਕੱਲ ਨੂੰ ਪਰਫਾਰਮ ਕਰ ਰਹੀਆਂ ਤੇ ਉਹ ਰਾਗ ਅਧਾਰਿਤ ਸਾਰੇ ਸਰੋਤਿਆਂ ਨੂੰ ਕਰਵਾਣੀ ਦੇ ਸ਼ਬਦ ਨਾਲ ਨਿਹਾਲ ਕਰਨਗੇ ਫਿਰ ਇਹ 9 ਵਜੇ ਤੋਂ ਤਕਰੀਬਨ 2:30 ਵਜੇ ਤੱਕ ਜੀ ਹੂੰ ਹੂੰ ਅੱਛਾ ਜੀ ਆਮ ਇਹ ਕਿਸ ਤਨ ਦੇ ਵਿੱਚ ਹਰ ਸਾਲ ਵੇਖਦੇ ਆ ਕਿ ਬੱਚੇ ਬਹੁਤ ਹੋ ਜਾਂਦੇ ਆ ਜੀ ਤੇ ਉਹਨਾਂ ਦਾ ਫਿਰ ਸਮਾਂ ਬਹੁਤ ਲੱਗਦਾ ਸੰਗਤ ਸਵੇਰ ਤੋਂ ਬਹੁਤ ਲੇਟ ਹੋ ਜਾਂਦੇ ਆ ਆਪਾਂ ਸੋ ਇਸ ਵਾਰ ਪਹਿਲਾਂ ਹੀ ਇਹਨਾਂ ਨੂੰ ਚੂਜ਼ ਕਰ ਲਿਆ ਆਪਾਂ ਕਿੰਨੀਆਂ ਟੀਮਾਂ ਰਹਿ ਗਈਆਂ ਫਿਰ ਮੁਕਾਬਲੇ ਲਈ ਖਾਲੀ ਵੀ ਜੀ ਇਹ ਪੂਰੀਆਂ ਜਿਹੜੀਆਂ 45 ਟੀਮਾਂ ਨੇ ਪਾਰਟਿਸਪੇਸ਼ਨ ਕੀਤਾ ਸੀ ਜਿਨ੍ਹਾਂ ਨੇ ਵੀਡੀਓ ਭੇਜੀਆਂ ਔਰ ਉਹਨਾਂ ਦੇ ਵਿੱਚੋਂ ਚੁਣੇੰਦਾ 17 ਟੀਮਾਂ ਜਿਹੜੀਆਂ ਅੱਭਲਾਈਆਂ ਨੇ ਉਹਨਾਂ ਨੇ ਪਰਫਾਰਮ ਕਰਨਾ ਸੰਗਤ ਦੇ ਸਾਹਮਣੇ ਕੱਲ ਤੇ ਸਰਦਾਰ ਦੂਖਨਵਾਰਨ ਸਾਹਿਬ ਦੇ ਵਿੱਚ ਸਵੇਰੇ 9:00 ਵਜੇ ਤੋਂ ਲੈ ਕੇ 2:00 ਵਜੇ ਤੱਕ ਪਰਫਾਰਮੈਂਸ ਹੈਗੀ ਉਸ ਤੋਂ ਬਾਅਦ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਜਿਹੜੀਆਂ 45 ਟੀਮਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਕੌਮ ਦੀਆਂ ਸ਼ਕਸ਼ੀਤਾ ਕਾਈਤਾਰੇ ਦੇ ਮੁਖੀ ਸਾਰੇ ਗੁਰਦੁਆਰਾਂ ਸਭਾਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ ਹੋਈ ਆ ਤੇ ਜਿਹੜੇ ਵੀ ਸੌਰੇ ਆਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹਾ ਦੁੱਤੀ ਜੇ ਆਪਾਂ ਕਰੀਏ ਹਰਵੰਦ ਜਲੰਧਰ ਦੇ ਵਿੱਚ ਕੀਤਾ ਜਾਂਦਾ ਹਰ ਸਾਲ ਉਹ ਬਹੁਤ ਵੱਡੇ ਪੱਧਰ ਦਾ ਸਮਾਗਮ ਆ ਪਰ ਆਉਣ ਵਾਲੇ ਸਾਲਾਂ ਵਿੱਚ ਤੁਸੀਂ ਦੇਖੋਗੇ ਕਿ ਇਹ ਵੀ ਸਮਾਗਮ ਭਾਈ ਮਰਦਾਨਾ ਕੀਰਤਨ ਸਮੇਲਨ ਵੀ ਆਉਣ ਵਾਲੇ ਸਮੇਂ ਵਿੱਚ ਇੱਥੇ ਦਾ ਹਰਵੰਦ ਦੇ ਲੈਵਲ ਦਾ ਤਾਂ ਨਹੀਂ ਸੋ ਨੇੜੇ-ਤੇੜੇ ਦਾ ਕਿਤੇ ਇਹ ਹੋ ਜਾਊਗਾ ਬਹੁਤ ਛੇਤੀ ਬੱਚੇ ਇੰਨਾ ਉਦਮ ਕਰਦੇ ਆ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਚਾਹੂੰਗਾ ਜਿਹੜੇ ਜੱਜ ਸਾਹਿਬਾਂ ਨੂੰ ਅਸੀਂ ਵੀਡੀਓਜ਼ ਭੇਜੀਆਂ ਤੇ ਉਹ ਆਪਣੇ ਆਪ ਨੂੰ ਤਿੰਦੇ ਕਹਾਉਂਦੇ ਕੌਮੀ ਹੀਰਿਆ ਕੀਤਨੀ ਆ ਉਹ ਪਹਿਲਾਂ ਕਹਿੰਦੇ ਵੀ ਮੇਰੇ ਤੋਂ ਨਾ ਕਰਾਓ ਮੇਰੇ ਲੈਵਲ ਦਾ ਇਹ ਕੰਮ ਨਹੀਂ ਹੋਣਾ ਅਸੀਂ ਕਹਾਂ ਜੀ ਹੋਰ ਤੁਹਾਡੇ ਤੋਂ ਵਧੀਆ ਕਿਹੜਾ ਜੱਜ ਹੋਊਗਾ ਜੇ ਤੁਸੀਂ ਨਹੀਂ ਕਰਨਾ ਤਾਂ ਕਹਿੰਦੇ ਚਲੋ ਤੇ ਵੀਡੀਓ ਭੇਜੀਆਂ ਉਹਨੇ ਦੇਖੀਆਂ ਤਿੰਨ ਵੀਡੀਓ ਦੇਖ ਕੇ ਉਹਨੀ ਨੂੰ ਫੋਨ ਵਾਪਸ ਕੀਤਾ ਕਿ ਸਾਡਾ ਖੁਦ ਦਾ ਲੈਵਲ ਨਹੀਂ ਜੇਸ ਲੈਵਲ ਦਾ ਇਹ ਬੱਚੇ ਕੀਰਤਨ ਕਰ ਰਿਆ ਜੀ ਕਮਾਲ ਉਹਨਾਂ ਨੇ ਹਾਥੀ ਜੋੜ ਦਿੱਤੇ ਇਸ ਬੱਚੇ ਕੀਰਤਨ ਕਰਦੇ ਗੁਰੂ ਸਾਹਿਬ ਦੀ ਮਿਹਰ ਆ ਕਿ ਇਸ ਲੈਵਲ ਦੇ ਬੱਚੇ ਆ ਇੱਥੇ ਰਾਗੀ ਤੁਹਾਡੇ ਵੀ ਇੰਡੀਆ ਤੋਂ ਆਉਂਦੇ ਨੇ ਸਾਰੀ ਸੰਗਤ ਸੁਣ ਪਹੁੰਚਦੀ ਆ ਜੇ ਆਪਣੇ ਇੱਥੋਂ ਦੀ ਪਨੀਰੀ ਇਸ ਲੈਵਲ ਦਾ ਕੀਰਤਨ ਕਰਦੀ ਆ ਤੇ ਅਸੀਂ ਆਸ ਕਰਦੇ ਆਂ ਤੇ ਉਹਨਾਂ ਨੂੰ ਵੀ ਸਾਥ ਪੜਾ ਸੰਗਤ ਜਰੂਰ ਪਹੁੰਚੇ ਨੇ ਬਿਲਕੁਲ ਜੀ ਸਾਰੇ ਪਹੁੰਚੋਗੇ ਹਰ ਸਾਲ ਆਉਂਦੇ ਆ ਤੇ ਬਹੁਤ ਵੱਡੀ ਹੈ ਵੱਡਾ ਉਦਮ ਹੈ ਗੁਰੂ ਮਹਾਰਾਜ ਦੀ ਕਿਰਪਾ ਤੇ ਉਹ ਮਾਪਿਆਂ ਦਾ ਧੰਨਵਾਦ ਜਿਹੜੇ ਆਪਣੇ ਬੱਚੇ ਨੂੰ ਇੰਨੀ ਮਿਹਨਤ ਕਰਾਉਂਦੇ ਆ ਤੇ ਸੰਗੀਤ ਉਸਤਾਦਾਂ ਦਾ ਧੰਨਵਾਦ ਜਿਹੜੇ ਕੰਤੀ ਸਾਜ਼ਾਂ ਦੇ ਵਿੱਚ ਰਾਗਾਂ ਦੇ ਵਿੱਚ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸਾਡਾ ਖਜ਼ਾਨਾ ਸਾਡਾ ਜਾਗਤ ਜੋਤ ਹੈ ਸਾਡਾ ਗੁਰੂ ਆ ਜਿਹੜਾ ਰਾਗਾਂ ਦੇ ਵਿੱਚ ਸਾਰੀ ਬਾਣੀ ਹੈ ਉਹਦਾ ਰਾਗਾਂ ਦੇ ਵਿੱਚ ਕਈ ਵਾਰ ਮੂਰੇ ਬੈਠੇ ਉਈਓ ਸਿਰ ਹਿਲਾਉਣਾ ਪੈਂਦਾ ਕਿਉਂਕਿ ਪਤਾ ਨਹੀਂ ਲੱਗਦਾ ਪਰ ਜਿਨ੍ਹਾਂ ਨੂੰ ਰਾਗਾਂ ਦੀ ਸਮਝ ਫਿਰ ਉਹ ਕਹਿੰਦੇ ਆ ਵੀ ਹਾਂ ਵਾਕਿਆ ਬਾਤ ਹੈ ਔਰ ਇਹ ਪ੍ਰਥਾ ਪੰਜਾਬ ਦੇ ਜਿਹੜੇ ਕੀਰਤਨੀਏ ਨੇ ਉਹ ਛੱਡ ਰਹੇ ਨੇ ਸਿੱਧੇ ਸਿੱਧਾ ਉਹ ਕੀਰਤਨ ਕਰਦੇ ਨੇ ਰਾਗਾਂ ਦੇ ਵਿੱਚ ਬਹੁਤ ਘੱਟ ਕੀਰਤਨ ਕਰਦੇ ਔਰ ਸਾਗ ਗੁਲਾਰ ਸਿੰਘ ਜੀ ਧੰਨਵਾਦ ਤੁਹਾਡਾ ਬਹੁਤ ਵੱਡਾ ਉਦਮ ਹੈ ਤੇ ਤੁਹਾਡੇ ਤੁਹਾਡੇ ਨਾਲ ਜਿੰਨੇ ਵੀ ਤੁਹਾਡੇ ਗੁਰਸਖੀਰ ਨੇ ਮਿੱਤਰ ਪਿਆਰੇ ਨੇ ਜਿਹੜੇ ਰਲ ਕੇ ਕਰਦੇ ਨੇ ਤੇ ਨਾਲ ਜਿੱਥੇ ਤੁਸੀਂ মিডিਆ ਦੇ ਵਿੱਚ ਸੇਵਾ ਕਰ ਰਹੇ ਹੋ ਉੱਥੇ ਦੂਖ ਨਿਵਾਰਨ ਗੁਰਦਵਾਰ ਸਾਹਿਬ ਤੁਸੀਂ ਰਲ ਕੇ ਕੱਲ ਦੇ ਵੱਡੇ ਸਮਾਗਮ ਨੇ ਤੇ ਸਾਰੇ ਉਸੇ ਪਹੁੰਚ ਰਿਹਾ ਖੀ ਚ ਕੁਸ਼ ਹੋਰ ਕਹਿਣਾ ਚਾਹੂੰ ਜੀ ਬਸ ਇਹ ਹੀ ਬੇਨਤੀ ਹੈ ਜੀ ਆਪ ਜੀ ਨੂੰ ਤੇ ਸ਼ੇਰੇ ਪੰਜਾਬ ਦੇ ਸਵਾਰ ਅਜੀਤ ਸਿੰਘ ਬਾਤ ਹੁਣਾਣੋ ਵੀ ਤੇ ਉਹ ਵੀ ਫੰਕਸ਼ਨ ਤੇ ਸ਼ੇਰੇ ਪੰਜਾਬ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਹਰ ਸਾਲ ਸਾਨੂੰ ਸਮਾਂ ਦਿੰਦੇ ਆ ਸਰੋਤਿਆਂ ਦੇ ਨਾਲ ਇਸ ਪ੍ਰੋਗਰਾਮ ਦੀ ਜਾਣਕਾਰੀ ਦੀ ਸਾਂਝ ਪਾਉਣ ਲਈ ਤੇ ਆਪ ਜੀ ਦਾ ਵਿਸ਼ੇਸ਼ ਧੰਵਾਦ ਜੀ ਜਿਨ੍ਹਾਂ ਨੇ ਸਮਾਂ ਦਿੱਤਾ ਬਹੁਤ ਮਿਹਰਬਾਨੀ ਜੀ ਕੱਲ ਨੂੰ ਤੁਹਾਡੇ ਦਰਸ਼ਨ ਕਰਾਂਗੇ ਬਾਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਪਾਰਕ ਸੰਦੇਸ਼ਾਂ ਤੋਂ ਬਾਅਦ ਨੌਜਵਾਨ ਮੁੰਡਾ ਡੋਨੀ ਭਾਈ ਦਾ ਨੀਨਾ ਜਿਹੜਾ WWE ਚ ਸਿਲੈਕਟ ਹੋਇਆ WWE ਦੀ ਟੀਮ ਆ ਇੱਕ ਜਿਹੜੀ ਸਾਰੀ ਦੁਨੀਆ ਦੇ ਵਿੱਚੋਂ ਜਿਹੜੇ ਅਲੀਟ ਐਥਲੀਟ ਨੇ ਜਿਨ੍ਹਾਂ ਦਾ ਸਰੀਰ ਸਰੀਰ ਤੋਂ ਬਾਅਦ ਉਹਨਾਂ ਦਾ ਐਕਟਿੰਗ ਲਾ ਲਓ ਆਰਟ ਲਾ ਲਓ ਐਥਲੀਟਿਕ ਬਾਡੀ ਲਾ ਲਓ ਉਹ ਟਰਾਇਲ ਕਰਕੇ ਆਈ ਪੰਜਾਬ ਤੇ ਨੀਨਾ ਦਾ ਨੰਬਰ ਆ ਗਿਆ ਨੀਨਾ ਹੁਣ ਟ੍ਰੇਨ ਹੋ ਰਿਹਾ ਹੈ ਦੇ ਵਿੱਚ ਸ਼ੈੱਟ ਨੀਨਾ ਡਰੋਲੀ ਪਾਈ ਸਨੱਖਾ ਮੁੰਡਾ ਤੁਸੀਂ ਇੱਥੇ ਦੇ ਕਬੱਡੀਆਂ ਦੇ ਖਿਡਾਂ ਦੇ ਵਿੱਚ ਉਸ ਨੂੰ ਵੇਖਿਆ ਬਹੁਤ ਵਧੀਆ ਰੇਡਰ ਤੇ ਕਿਸਮਤ ਦਾ ਕੋਈ ਨਹੀਂ ਜਿਹੜੇ ਮੱਥੇ ਦੀਆਂ ਲਿਖੀਆਂ ਕੋਈ ਨਹੀਂ ਮੋੜ ਸਕਦਾ ਔਰ ਕੋਈ ਨਹੀਂ ਕਿਸ ਨੂੰ ਢਾ ਸਕਦਾ ਵਪਾਰ ਤੋਂ ਬਾਅਦ ਨੀਨਾ ਡਰੋਲੀ ਪਾਈ WWE ਤੇ WWF ਨੂੰ ਤੁਸੀਂ ਵੇਖਦੇ ਹੋ ਬਹੁਤ ਆਰਟ ਹੈ ਆਰਟ ਉਦੇ ਵਿੱਚੋਂ ਕਰਦੇ ਆ ਪਰਫਾਰਮ ਕਰਨਾ ਪੈਂਦਾ ਐਕਟਿੰਗ ਹੈ ਡਿਗਦੇ ਆ ਛਾਲਾ ਮਾਰਦੇ ਪਰ ਸਰੀਰ ਤਾਂ ਤਕੜਾ ਹੋਣਾ ਚਾਹੀਦਾ ਜੇ ਸਰੀਰ ਤਕੜਾ ਹੋ ਉਹਦੇ ਚੋਂ ਤਾਂ ਸਭ ਗੱਲ ਨਿਕਲੂ ਤੇ ਬਹੁਤ ਇੱਕ ਕਿਸਮ ਦੀ ਐਡਿਕਸ਼ਨ ਹੈ ਜਦੋਂ ਤੁਸੀਂ ਵੇਖਣ ਲੱਗ ਜਾਂਦੇ ਹੋ ਫੇਰ ਸ਼ੁੱਕਰਵਾਰ ਨੂੰ ਹੁਣ ਤਾਂ ਸੋਮਵਾਰ ਨੂੰ ਵੀ ਆਉਂਦਾ ਮੰਗਲਵਾਰ ਨੂੰ ਵੀ ਆਉਂਦਾ ਤੇ ਗੱਲਾਂ ਬਾਤਾਂ ਡਾਇਲੌਗ ਬੋਲਦੇ ਆ ਅੰਦਰੋਂ ਨਿਕਲਦੇ ਆ ਤਕੜੇ ਸਰੀਰ ਨੇ ਕਈ ਤਾਂ ਬਾਹਲੇ ਤਕੜੇ ਪੁਰਾਣੇ ਜਿੰਨੇ ਵੀ ਰੌਕ ਵਰਗੇ ਜਿਹੜੇ ਹੁਣ ਫਿਲਮਾਂ ਚਲੇ ਗਏ ਤੇ ਜੋਨ ਸੀ ਨਾ ਤੇ ਬਹੁਤ ਨਾਉ ਨੇ ਪਰ ਪੰਜਾਬ ਦੇ ਤੇ ਪਿੰਡਾਂ ਦੇ ਵਿੱਚੋਂ ਤੋਂ ਖਲੀ